ਰਾਮ ਨਾਮ ਆਤਮਾ ਸੋਧੇ ਪੰਡਤ ਉਹ ਹੈ ਸੋਧ ਦੇ ਵਿੱਚ ਅਸਲ ਪੰਡਤ ਉਹ ਹੈ ਜਿਹੜਾ ਆਪਣੀ ਬੁੱਧੀ ਕੋਈ ਜਨਵਰ ਕੋਲ ਗਿਆਨ ਹੈ ਪੈਣਾ ਜਿੰਨਾ ਉਹਦੇ ਕੋ ਗਿਆਨ ਹੈ ਪਹਿਲਾਂ ਜਿੰਨੀ ਉਹਦੇ ਕੋ ਬੁੱਧੀ ਹੈ ਪਹਿਲਾਂ ਉਹ ਬੁੱਧੀ ਤੇ ਹੋਰ ਗਿਆਨ ਚੜਾਵੇ ਉਹ ਪੜ੍ਹਦਾ ਜੇ ਉੱਥੇ ਗਿਆਨ ਹੋ ਨਹੀਂ ਜਿਗਿਆ ਰਹੇ ਤਾਂ ਛੱਪੜੇ ਪਰ ਨਹੀਂ ਹੁੰਦਾ ਜੇ ਲੱਚਰਦਾ ਅਪਾੜੀ ਹੋ ਉਹ ਖਰਾਬ ਨਹੀਂ ਹੁੰਦਾ ਖੜਾ ਪਾਣੀ ਖੜਾ ਹੋ ਜਾਂਦਾ ਜੇ ਗਿਆਨ ਲਗਾਤਾਰ ਵਧਾ ਰਹੇ ਤੇ ਖਰਾਬ ਨਹੀਂ ਹੁੰਦਾ ਜੋ ਆ ਗਏ ਖੜਾ ਹੋ ਗਏ ਖੜਾ ਹੋ ਗਏ ਸਾਡੇ ਗਿਆਨ ਖੜੇ ਨੇ ਰੁਕੇ ਹੋਏ ਨੇ ਜੋ ਟੀਕੇ ਨੇ ਸਭ ਰੁਕੇ ਖੜੇ ਨੇ ਦਿਨਾਂ ਕਾਲ ਨੂੰ ਗੱਲਬਾਤ ਹੀ ਨਹੀਂ ਲੋਕਾਂ ਦੇ ਗਿਆਨ ਦੀ ਬਾਤਾਂ ਨਹੀਂ ਹੋ ਰਹੀ ਐ ਚੱਲ ਨਹੀਂ ਰਹੀ ਸੀ ਉੱਡ ਚੱਲਦੀ ਐ ਚਲਾਈ ਐ ਪਹਿਲੇ ਪਿੱਛੇ ਗਿਆਨ ਖੜਾ ਟੀਕੇ ਆ ਗਏ ਖੜਾ ਉਹ ਪੰਡਤ ਲਿਖਦੇ ਨੇ ਆਪਣੇ ਆਪ ਨੂੰ ਪੰਡਤ ਥੇ ਜਿਹੜੇ ਪੰਡਤ ਨੇ ਹੈਨ ਸਿਉ ਆ ਪੰਡਤ ਦਾਸਾ ਸੁਤੋਤਮ ਹੈ ਨਹੀਂ ਇਸੀ ਪੰਡਤ ਦੇ ਪੱਤਨ ਤੋਂ ਖੋਣ ਵਾਲਾ ਗਿਆਨ ਹੈ ਸੇਵਲ ਗਿਆਨ ਹੈ ਖੜਾ ਗਿਆ ਉਹਨਾਂ ਕੋਲ ਚੜ ਗਿਆ ਉੱਚੇ ਤੇ ਉੱਚਾ ਚਲਦਾ ਨਹੀਂ ਹੈ ਗਿਆਨ ਪ੍ਰੋਬਲਮ ਜੀ ਹੁੰਦੀ ਸਾਡੇ ਕੋਲ ਉਹਦਾ ਮੁੜ ਕੇ ਬਾਇਆ ਨੂੰ ਲਾਤਾ ਗਿਆ ਹਨ ਮਾਇਦੇ ਪੁਜਾਰੀ ਬਣਾਤੇ ਮੇਰਾ ਘਰ ਦੇ ਪੁਜਾਰੀਆਂ ਨੂੰ ਛੱਡ ਕੇ ਮੇਰਾ ਦਾਤ ਨੂੰ ਛੱਡ ਕੇ ਉਹਨਾਂ ਤੇ ਚੱਲ ਮਾਇਆ ਨਾਲ ਜੋੜ ਤੇ ਉਸਾ ਗ੍ਰੰਥ ਚੋਂ ਗੁਰੂ ਮੰਨਣਾ ਲਾਜ਼ਮੀ ਹੈ ਮਨਾ ਸਰ ਗ੍ਰੰਥ ਤਾਂ ਜਾੜਾ ਉਹਦਾ ਖੁਦੋਂ ਵੀਰ ਹੈ ਸਭ ਕੁਝ ਚੇਤਨ ਜਿਹੜਾ ਹੈ ਉਹ ਖਾਨੂੰ ਨਹੀਂ ਦੋ ਜਿਹੜਾ ਉਹਨੂੰ ਗੁਰੂ ਮੰਨਦਾ ਉਹ ਖਾਤੂ ਧੀਨਾ ਨਹੀਂ ਜਿਹੜੂ ਗੁਰੂ ਮੰਨਦਾ ਉਹ ਖਾਨੂੰ ਧੀਨਾ ਇਹ ਕੰਮ ਹੋ ਗਿਆਨ ਗੁਰੂ ਮੰਨਿਆ ਜਾ ਸਕਦਾ ਸੀ ਗਿਆਨ ਖਾਣੇ ਵੀ ਨਾ ਹੁੰਦਾ ਗਿਆਨ ਖਾਣ ਦੇਖਣ ਵਾਲੀ ਜਗ੍ਹਾ ਨਹੀਂ ਹੈ ਬੁਰਦੀ ਨਾ ਸਮਝਿਆ ਅਲਿ ਸੀ ਜਿਆ ਤੇ ਆ ਜਿਹੜਾ ਗਿਆਨ ਭਰਮ ਦਾ ਨਾਸ ਕਰ ਦਿੰਦਾ ਉਹ ਗਿਆਨ ਗੁਰੂ ਹੈ ਚਾਹਾਂ ਕਰਦਾਂ ਸਾਰੇ ਅੰਦਰ ਚਾਹਾਂ ਕਰਦਾਂ ਕਿਤੇ ਹਨੇਰਾ ਨਹੀਂ ਰਹਿੰਦਾ ਉਹ ਗੁਰੂ ਹੈ ਜਿੰਨਾ ਹਨੇਰਾ ਅੰਧਲਾਤਕਾਰਾ ਨੂੰ ਮਟਾ ਦੇਣ ਵਾਲਾ ਜੋ ਗਿਆਨ ਉਹਦਾ ਨਾ ਗੁਰੂ ਹੈ ਜਾਨ ਗੁਰੂ ਆਤਮ ਗੁਰੂ ਦੇਸ हां जदा पट्टत को गया ठीक है लीला फलांगे कुर्बानी किया कुर्बानी किया गुरु है पर पट्ट तो जा गुरु प्रकट भी पट्टत हो गया पट्टत ने सगोण लुक होत पट्टत ने बेरडक ਪੰਡਤਾਂ ਨੇ ਗੁਰਬਾਣੀ ਪੜ੍ਹੀ ਗੁਰਬਾਣੀ ਨੂੰ ਪੜਿਆ ਗੁਰਬਾਣੀ ਦਾ ਅਰਥਾਈ ਪੰਡਤਾਂ થી ਉਹਨਾਂ ਨੇ ਆਪਣੇ ਪੜਤਉ ਉਹਨੇ ਨਾੜਾ ਪੜਨੇ ਜਿਹੜੇ ਲਫ਼ਜ਼ ਭਾਸ਼ਾ ਜਾਣਦੇ ਤੇ ਉਹਦੇ ਅਧਾਰ ਤੇ ਗੁਰਬਾਣੀ ਨੂੰ ਅਰਥਾ ਦ ਉਹ ਜਿਹੜੇ ਲਫ਼ਜ਼ ਨੇ ਪੜਤ ਭਾਸ਼ਾ ਦੇ ਸ਼ਾਸਤਰੀ ਭਾਸ਼ਾ ਦੇ ਦਰਸਾਂ ਤੋਂ ਇਹ ਜਿਹੜੇ ਜਿਹੜੇ ਲਫ਼ਜ਼ਾਂ ਤੇ ਉਹਨਾਂ ਦੇ ਅਰਥ ਹੋਰ ਨੇ ਬਖਰੇ ਦੇ ਵਿੱਚ ਦਿੱਤੇ ਹੋਏ ਨੇ ਕਿ ਬਾਜੂ ਦੁਆਰ ਤੇ ਪਲਟਿਆ ਹੈ ਸੋ ਬੈਠ ਐਸੋ ਜੇ ਉਪਰ ਤੋਂ ਉਪਰ ਸੰ ਅਨੇ ਦਾ ਨੋ ਪਲਟਿਆ ਹੈ ਇੱਥੇ ਅਨੇ ਇਹ ਨਾਖੀਆਂ ਜਿਹੜੇ ਗੁਰੂਵਾਨਾ ਹੈ ਅੰਤੇ ਜਿਹਨਾਂ ਦਾ ਜੋ ਇਹ ਜਿਹੜਾ ਕੁਝ ਪਲਟਿਆ ਹੈ ਗੁਰਬਾਣੀ ਦੇ ਵਿੱਚ ਭਾਸ਼ਾ ਦੋਨੀ ਦੀ ਬੜਾ ਹੀ ਉਹ ਭਾਸ਼ਾ ਦਾ ਤਾਂ ਜਰੂਰ ਕੋਈ ਕੋਲ ਖੜਾ ਗਿਆ ਤੁਸੀਂ ਖੜੋ ਪਹਿਲਾਂ ਸ਼ਾਸਤਰਾਂ ਦੇ ਉਹ ਖੜੇ ਗਿਆ ਨਾਲੇ ਖੜਾ ਗਿਆਨ ਕਰਦਾ ਇਹ ਚੱਲਦਾ ਗਿਆ ਹੁੱਚੇ ਤੇ ਉੱਚਾ ਬੋਲਣ ਲੱਗ ਪਿਆ ਇਹ ਗੁਰਤਾ ਦਰਿਆ ਹੈ ਇਹ ਜਾਣਦਾ ਦਰਿਆ ਹੈ ਗੁਰਬਾਣੀ ਜੀ ਅੱਜ ਜਿਹੜੇ ਅਰਥ ਕੱਲੇ ਕਲਮ ਦੇ ਆਪਾਂ ਕੱਲ ਨੂੰ ਪੂਜਾਂਗੇ ਕੋਈ ਹੋਰ ਨਖੜੇ ਹੋਣਾ ਨਾ ਜੋ ਜੇ ਜਿੱਥੇ ਇਹਨਾਂ ਵਿਚਾਰਾਂ ਦੇ ਹੋਰ ਨਖੜੇ ਹੋਣਾ ਹੈ ਜੋ ਬਾਤ ਸਮਝ ਆ ਜਾਣੀ ਹੈ ਇਹ ਦਰਿਆ ਵੋ ਜਿਨਾ ਜਦ ਸਮੁੰਦਰ ਤੱਕ ਰੋਲ ਜਾਂਦਾ ਹੈ ਜਲਦੀ ਜਾਣੇ ਪੰਡਤ ਨਹੀਂ ਸੀ ਪਰ ਲੋਕ ਕਹਿ ਰਹੇ ਗੁਰਬਾਣੀ ਦੇ ਪੰਡਤ ਨਹੀਂ ਸੀ ਗੁਰਬਾਣੀ ਦੀ ਸੌਕੀ ਤੇ ਪੰਡਤ ਖਰੇ ਨਹੀਂ ਸੀ ਜੋ ਪੰਡਤ ਜੋ ਬੰ ਪ੍ਰਬੁੱਤ ਜੇ ਉਹ ਗੁਰਬਾਣੀ ਨੂੰ ਗੁਰੂ ਮੰਨ ਕੇ ਗੁਰਬਾਣੀ ਤੋਂ ਪੜ੍ਹਦੇ ਫਿਰ ਉਹ ਆਦੇ ਮੰਦ ਦੇ ਉੱਤੇ ਜੋ ਪਹਿਲਾਂ ਗਿਆਨ ਜਿਉਂ ਤੇ ਗਿਆਨ ਹੋ ਆ ਕੇ ਫਿਰ ਪ੍ਰਬੁੱਤ ਆ ਜਾਂਦਾ ਪ੍ਰਬੁੱਤ ਹੋ ਜਾਂਦਾ ਜੋ ਬੁੱਧ ਉਹਨਾਂ ਕੋ ਜਿਹੜਾ ਦੇ ਬੁੱਧ ਹੋ ਆ ਜਾਂਦੀ ਉਹ ਬਾਣੀ ਉਹ ਕੋਈ ਗੁਰੂ ਤੋਂ ਉਹਨਾਂ ਹੋਰ ਬੁੱਧ ਪ੍ਰਾਪਤ ਹੋ ਜਾਂਦੀ। ਹੋਰ ਰੋਜ ਪ੍ਰਾਪਤ ਹੁੰਦੀ ਹੁੰਦੀ ਆਖਰ ਉਹਨਾਂ ਦੀ ਬੁੱਧ ਬਿਲਕੁਲ ਹੀ ਬਦਲ ਜਾਂਦੀ। ਬੁੱਧ ਬਦਲਣ ਦਾ ਨਿਸ਼ਾਨ ਪਾਈ। ਉਹਨਾਂ ਕਹਿ ਚਾਹੀਦਾ ਸੀ। ਲੇਕਿਨ ਉਹ ਪੰਡਤ ਜੀ ਸੀ। ਉਹ ਬਾਹਮਣ ਜੀ ਗੌਰਵ। ਵਡਿਆ ਬਾਹਮਣ ਕਾਪਟੇ ਹੋਏ ਜੀ। ਬੋਮਲ ਦਾਇਕਾ ਜਨਮ ਮਤ ਹੋਏ ਉਹਨਾਂ ਨੇ ਬੋਮਲ ਦਾਇਕਾ ਕੇ ਆਪਣਾ ਜਨਮ ਪੋਇਆ ਸਾਡਾ ਵੀ ਹੋਤਾ ਸਿਕੰਦਰ ਅਜੀਮਾਂ ਲਿਆ ਪੰਡਤ ਨੇ ਅਜੀਦੇ ਪੜੇ ਹੋਏ ਲਿਆ ਕੇ ਟੀਕੇ ਕਰਾ ਰਿਹਾ ਸੀ ਕਵੀਰ ਜਿੰਨਾ ਤੁਸੀਂ ਅਫਤ ਕਰਾ ਲੇ ਉਹ ਤੇ ਅਫਤ ਕਰਾ ਲੇ ਜੀ ਗੁਰਬਾਣੀ ਕਹਿੰਦੀ ਹੈ ਕਾਇਰੇ ਪੜਿਆ ਸਭ ਹੋਏ ਬਾਹਮਣ ਕਾ ਕਾ ਜਾਨ ਨੂੰ ਮਤ ਖੋਏ ਤੇ ਬ੍ਰਾਹਮਣ ਦਾ ਉਸ ਤੈਨੂੰ ਬ੍ਰੰਭ ਚਾਹੇ ਪੱਠ ਸੋਝ ਮਨ ਪਰਬੋਦੇ ਜਦ ਕੋਈ ਇਹੋਂ ਆਂਦੀ ਨਾ ਗੁਰੂਪ ਉਹ ਕੇ ਜੋਗੋਪਾਲ ਪੰਡਤ ਸਦੇ ਉਹ ਕਹਿੰਦੇ ਕੇ ਸ਼ੋਗਪਾਲ ਪੰਡਤ ਸੁਦੇ ਨੇ ਉਹ ਉਹ ਇਹੋ ਬਣ ਉਹ ਨਹੀਂ ਨਾ ਗੁਰੂਪ ਉਹਦਾ ਨਹੀਂ ਕਹਦਾ ਕੇ ਸ਼ੋਗਪਾਲ ਪੰਡਤ ਸਦੇ ਉਹ ਹਰ ਹਰ ਕਥਾ ਪੜੇ ਪ੍ਰਾਨ ਜਿਉ ਹਰ ਹਰ ਘਰ ਦੀ ਕਥਾ ਗੁਰਬਾਣੀ ਦੀ ਕਥਾ ਕਰਕੇ ਸੁਣਦੇ ਹਰਦਾ ਜੀ ਗੁਰਬਾਣੀ ਦੀ ਕਥਾ ਦੱਸੇ ਇਹ ਪ੍ਰਾਨ ਇਹਦਾ ਖੁੱਲੇ ਨਾ ਹਰ ਤੱਕ ਲੈ ਜਵੇ ਹਰ ਦੀ ਹਰ ਸਮਝ ਆਵੇ ਕਿ ਹਰ ਹਿਰਦੇ ਚ ਉਹਦਾ ਦਰਸ਼ਨ ਕਰਾ ਕਥਾ ਕਰਕੇ ਉਹ ਪੰਡਤ ਜਿਹਦਾ ਸੀ ਉਹ ਪੰਡਤ ਜਿਹੜੇ ਗੁਰਬਾਣੀ ਦਾ ਪੰਡਤ ਸੀ ਜਦसे ਆਇਆ ਜੇ ਇਹ ਪੰਡਤ ਲੈਉਂਦਾ ਤਾਂੀ ਦੇ ਢੀਂਸੀ ਠੀਕ ਹੈ ਤੁਹਾਡੇ ਠੀਕ ਕਿ ਮੈਂ ਹੁੰਦਾ ਪੰਡਤ ਤਾਂ ਡੁਪਲੀਕੇਟ ਲੈ ਲਿਆ ਡੁਪਲੀਕੇਟ ਪੰਡਤਾਂ ਨੇ ਕਿਹਾ ਕਿ ਡੁਪਲੀਕੇਟ ਅਸਲ ਦੇ ਡੁਪਲੀਕੇਟ ਕਰ ਬਣਾ ਲਿਆ ਡੁਪਲੀਕੇਟ ਨਾਮ ਹੋ ਗਿਆ ਡੁਪਲੀਕੇਟ ਦਾ ਦਾ ਹੋ ਗਿਆ ਡੁਪਲੀਕੇਟ ਜਾਪੋ ਹੋ ਗਿਆ ਡੁਪਲੀਕੇਟ ਚਾਰ ਪਦਾਰਥ ਹੋ ਗਏ ਡੁਪਲੀਕੇਟ ਿਆਰੇ ਜੋਗੋ ਹੋਵੇ ਡੁਪਲੀਕੇਟ ਿਆਰੇ ખાણિયા ચારે બાણિયા બસ ખાણિયા તો ચારે ડુપ્લીકેટ થી પણ ચાર બાણિયા જરૂર ડુપ્લીકેટ બરબરતી મધમાન બેસે ચારે જુગ તો ડુપ્લીકેટ હો ગય સર્ગોડ નિર્ગોડ ડુપ્લીકેટ હો ગય સબને ઓ રચણહાર અને સજનહાર ડુપ્લીકેટ હો ગય તો બેઠી ગયા ਇਹ ਤਾਂ ਬੇਸਿੱਤ ਚੀਜ਼ਾਂ ਦੇ ਧਰਮ ਦੀਆਂ ਤੁਹਾਡਾ ਜਿਹਨੇ ਲਵਜ਼ ਜੀ ਸੀਤਾ ਲਜੁਨ ਡੁਪਲੀਕੇਟ ਹੋ ਗਿਆ ਰਾਵਣ ਡੁਪਲੀਕੇਟ ਹੋ ਗਿਆ ਲਖਮਣ ਡੁਪਲੀਕੇਟ ਹੋ ਗਿਆ ਬੁਕਰਸਾਨ ਡੁਪਲੀਕੇਟ ਹੋ ਗਿਆ ਅਸਲੀ ਤਾਂ ਛੱਡੀ ਕੁਛ ਨਹੀਂ ਅਸਲੀ ਕੁਛ ਨਹੀਂ ਹੋਇਆ ਉਹ ਤਾਂ ਸੁੱਧ ਤੇ ਸਬਰ ਤੇ ਸ਼ਾਸਤਰਾਂ ਵਾਲੇ ਸਹੀ ਮੰਨ ਲੈ ਜਿਹੜੇ ਸੋਧੇ ਤੇ ਸਮਰਤ ਸਾਥਕ ਸੋਧ ਕੇ ਦਿੱਤੇ ਤੇ ਉਹ ਬੰਦ ਦੇ ਪੀਰਾਂ ਨੇ ਸ਼ੁਰੂ ਕਰਾਂ। ਜਿਹਨਾਂ ਨੂੰ ਕਿਹਾ ਸੀ ਇੰਤਰ ਦਰਿਆ ਸੀ। ਇਹ ਜਿਹੜੇ ਸਮਰਤ ਸਾਥਕ ਅਖਰ ਅਸੀਂ। ਤੁਸੀਂ ਅਖਰ ਕੀਤੇ ਅਖਰ ਲੈ ਸੀ। ਕਿ ਜੇ ਨਾਮ ਕਾ ਅਖਰ ਇਹ RAM ਨਾਮ ਬਣਾਏ ਤੇ ਅਖਰ ਦੇ ਵਿੱਚ ਉਹ RAM ਨਾਮ ਵਾਲੇ ਚੱਕ ਕੇ ਪਿੱਛੇ ਫੇਰ ਬੋਲਦੇ। ਜੋ ਵੀ ਵਰਮਨਾ ਸਰੋਪ ਆਇਓ ਰਿਜੇਗ ਰੇਕੋਰਾ ਇੰਟਰਪਰੇਟੇਟਰ ਕਰਨਾਰੇ ਕੌਨ ਸੀ ਕਨਾਰੇ ਜੀ ਉਹ ਜਿਹੜੇ ਪੰਡਤ ਐ ਨਾ ਖਾਸੀ ਵਾਲੇ ਬਨਾਰਸ ਦੇ ਠੱਗ ਉਹਨਾਂ ਦੇ ਜੀ ਕੰਦੇ ਸਾਰੇ ਜੀ ਤੇ ਕੰਪਨੀ ਉਹਨਾਂ ਨਾਲ ਰਹੇ ਹੋਏ ਤੇ ਸ੍ਰੀ ਕੰਨ ਦੇ ਉਹਨਾਂ ਨਾਲ ਰਹੇ ਹੋਏ ਸੀ ਉਹ ਭਾਈ ਗੁਰਦਾਸ ਉਹੀ ਲੈ ਕੇ ਆਏ ਕਾਸ਼ੀ ਪੜਾ ਕੇ ਝੂਠਾ ਬਣਾਇਆ ਗੱਲ ਵੀ ਕਾਸ਼ੀ ਪੜਨ ਭੇਜੇ ਉਹ ਕਾਸ਼ੀ ਵਾਲੇ ਤਾਂ ਬਿਲਕੁਲ ਕਾਸ਼ੀ ਤਾਂ ਵਿਧਿਆ ਕਾਸ਼ੀ ਤਾਂ ਕਹਿ ਰਿਹਾ ਬੈਠ ਕੇ ਮਾਦੋ ਵਿਪਿਆ ਹਿਤ ਕੀਨ ਦੀ ਬਲੀ ਉਹਨਾਂ ਦਾ ਬਵੇ ਦੀ ਬਲੀ ਨਾ ਤੁਸੀਂ ਉਹਨਾਂ ਦੇ ਹੱਥ ਕਰਾ ਰਹੇ ਹੋ ਕੁਰਬਾਨੀ ਦੇ ਆਂਡਾ ਫਟ ਗਿਆ ਬਿਲਕੁਲ ਚਰਾਹੇ ਜਿਹਨਾਂ ਦਾ ਉਹਨੇ ਜਵਾਬ ਦੇਣਾ ਤੇ ਨਹੀਂ ਹੈ ਜਗਲੇ ਚੁੱਪ ਬੈਠੇ ਰਹੇਗਾ ਮਨ ਕਰੇ ਤਾਂ ਨਹੀਂ ਕਿਚੂ ਦੀ ਚੋਰਾਂ ਤੋਂ ਸਾਥ ਬਣ ਕੇ ਇਹ ਚੋਰ ਸਾਥ ਬਣੇ ਬੈਠੇ ਤੇ ਸਾਰੇ ਚੋਰ ਸਾਥ ਕਰਦੇ ਵੀ ਚੋਰ ਹੁੰਦੇ ਸਾਥ ਹੈ ਨਹੀਂ ਕਿ ਸਾਥ ਦੇ ਤੇ ਰਾਮਨਾਮ ਆਤਮਾ ਸੋਹਦਾ ਸੋਦੇ ਆ ਕਰਦੇ ਤਾਂ ਆਜਾ ਨਾ ਕੀਤਾ ਆ ਪੜਿਆ ਤਾਂ ਰੋਸ ਹੋਣੀ ਕਰਦੇ ਕਬ ਨੱਸਦਾ ਨਾ ਕੀਤਾ ਸੋ ਪੰਡਤ ਜੋ ਮਨ ਪਰ ਬੁੱਧ ਰਾਮ ਨਾਮ ਆਤਮੈ ਸੁੱਧ ਇਹ ਸੰਤ ਨੇ ਕੋਈ ਸੰਤ ਨਹੀਂ ਪੰਡਤ ਸੁਹਾ ਪੰਡਤ ਦੇ ਚੇਲੇ ਨੇ ਇਹ ਉਹ ਸਾਖੀਆਂ ਜੋ ਛੁੜਦੇ ਲਿਖੀਆਂ ਹੋਈਆਂ ਨੇ ਪੰਡਤ ਦੀਆਂ ਲਿਖੀਆਂ ਹੋਈਆਂ ਨੇ ਬੁੱਧਵਾ ਦੀਆਂ ਉਹ ਤਾਂ ਸੁਣਾਉਂਦੇ ਨੇ ਵੇਖਾ ਲਓ ਦੋ ਜੀ ਸੰਤ ਉਹਦਾ ਕੋਜੀ ਹੋਵੇ ਖੋਜੀ ਹੋਵੇ ਸੰਕਾਇਰ ਆ ਵੀ ਆਪਣੀ ਖੋਜ ਉਸੀ ਇੱਕ ਕਸੰਤ ਦਸਨਰੀ ਕੋਇਆ ਕੱਖ ਦੀ ਬੱਲੇ ਦੇ ਉਹ ਪੜ ਕੇ ਸੁਣਾ ਦੂਗਾ ਲਿਖਿਤ ਹੈ ਕੀ ਤੇ ਸੋ ਪੰਡਤ ਜੋ ਮਨ ਪਰਬੋਧਾ RAM ਨਾਮ ਕਟਨ ਤੇ ਚੌਕ ਰਿਓ ਆ ਗੱਲ ਕਹਾਂ ਦੀ ਪੰਡਤ ਮਾਰੂਗਾ ਤੁਹਾਨੂੰ ਪੰਡਤ ਤੇ ਖਰਾਬ ਹੈ ਸਾਰੀ ਕਾਸ਼ੀ ਦੇ ਪੰਡਤ ਤੇ ਖਰਾਬ ਹੈ ਸਭ ਕੁਝ ਹੈ ਸੁਭਰਤ ਸ਼ਾਤਾ ਤੇ ਹੈ ਸਭ ਕੁਝ ਹੈ ਉੱਥੇ ਮਾਰੂਗਾ ਜਿੱਥੇ ਪਾਣੀ ਹੋਵੇ ਉਹਦੇ ਸਿੱਟੂ ਵੀ ਆ ਕੇ ਪਾਣੀ ਤੇ ਤਲਵਾਰ ਲੱਗ ਗਈ ਕਹਿੰਦੇ ਕੱਲ੍ਹ ਕੋਈ ਹੋਈ ਬੰਗਾ ਪਾਣੀ ਉਹਦੇ ਜੇ ਲੈਣੇ ਲਾ ਰਹੀ ਮਾਰਾ ਸਰ ਸੋ ਪੰਕਤਿ ਜੋ ਮਾਰੇ ਪ੍ਰਭੂ ਦੇ ਰਾਮਨਾਮ ਆਤਮਾ ਸੋਦੇ ਹਾਂ ਰਾਮ ਰੋਗ ਜਪੜੂ ਕੇ ਆਇਆ ਨਾ ਰਾਮਨਾਮ ਸੁਣ ਨੂੰ ਕੀ ਹੋਇਆ ਸੋਧਣ ਨੂੰ ਕੀ ਹੋਇਆ ਇਹਨਾਂ ਕੋ ਰਾਮਨਾਮ ਅਸ਼ੁੱਧ ਸੀ ਪੰਡਤ ਕੋ ਅਸ਼ੁੱਧ ਲਈ ਬੈਠੇ ਜੀ ਰਾਮ ਰਾਮ ਕਰਤਾ ਸਭ ਜਗਵਾਨਾ ਰਾਮਨਾ ਆਇਆ ਜਾਏ ਫਿਰ ਤੋਤੀ ਟਿੱਕਾ ਵਾਲਾ ਬਾਣਾ ਲੋਕਨ ਰਾਮ ਖਿਲਾਉਣਾ ਗਾਣਾ ਇਹਨਾਂ ਨੇ ਤਾਂ ਖਿਲਾਉਣਾ ਬਣਾਇਆ ਸੀ ਨਾ ਇਹਨਾਂ ਦਾ ਰਾਮ ਖਿਲਾਉਣਾ ਉਹ ਖਿਲਾਉਣੇ ਵਾਲੇ ਅੱਜ ਤੁਸੀਂ ਕਰੀ ਜਾਂਦੇ ਹੋ ਸੁੱਤੇ ਪਾਇਆ ਸੁੱਤੇ ਹੁੜੀ ਪਾਇਆ ਉਹ ਵੀ ਪਾਇਆ ਨੇ ਇਹ ਸੁੱਤੇ ਹੀ ਰਹਿ ਜਾਣੇ ਨੇ ਜਦ ਯਾਗ ਪਿਆਸ ਤੇ ਕਹਿੰਦਾ ਹੋਰੇ ਕਵਿਆਦਾ ਜਾਣੇ ਜਾਗਦੇ ਆ ਨੇ ਲੈ ਜਾਣੀ ਅਜੀਬ ਇਹ ਸੁੱਤੇ ਹੀ ਰਹਿ ਜਾਣੇ ਨੇ ਕੋਈ ਯਾ ਲਕਰੇ ਜਲ ਪਾਣਾ ਵਰਤ ਜਾਣਾ ਨੇ ਦੇਤੇ ਹਾਂਜੀ ਰਾਮ ਨਾਮ ਆਤਮ ਨੂੰ ਸੋਧੇ ਆਪਣੇ ਅੰਦਰ ਆਤਮਾ ਦੇ ਵਿੱਚ ਵਿਚਾਰ ਕਰਕੇ ਰਾਮ ਨਾਮ ਨੂੰ ਸੋਧ ਕੇ ਲਿਆ ਪਰ ਰਾਮ ਨੂੰ ਮੁੱੰਦਰ ਕੀ ਹੈ ਜੇ ਰਾਮ ਤੋਂ ਨਾਮ ਦਾ ਨਾਮ ਵੱਡਾ ਹੈ ਸ਼ਕਤੀशाली ਹੈ ਫਿਰ ਕੀ ਹੈ ਪਹਿਲੀ ਗੱਲ ਰਾਮ ਇੱਕ ਵਿਅਕਤੀ ਹੋਵੇ ਜੇ ਹੈ ਜੇ ਬੁੱਢੇ ਆ ਤਾਂ ਉਹਦਾ ਨਾਉ ਰਾਮ ਹੈ ਰਾਮ ਆਪਣੇ ਆਪ ਇੱਕ ਨਾਮ ਹੈ ਕਿਸੇ ਵਿਅਕਤੀ ਦਾ ਇੱਕ ਵਿਅਕਤੀ ਹੈ ਰਾਮ ਇੱਕ ਉਹਦਾ ਨਾਮ ਹੈ ਰਾਮ ਕੋ ਵਿਅਕਤੀ ਹੈ ਉਹਨਾਂ ਨਰਾਮ ਇੱਕ ਵੇਖ ਪੀਅਰ ਦਾ ਨਾਮ ਸ਼ਾਮ ਤੇ ਰਾਮ ਨੋ ਰਾਮ ਨਾਮ ਪੜਾ ਤੁਮ ਹੋਇਆ ਬਥੇ ਸਮਝ ਲਗੀ ਰਾਮ ਪੜਾ ਨਾਮ ਨਹੀਂ ਬੜਾਉਂਦਾ ਰਾਮ ਨੇ ਨਾਮ ਲਿਖਦਾ ਰਾਮ ਆਪਣਾ ਨਾਮ ਕੱਲ ਨੂੰ ਬਦਲੂ ਮੇਰਾ ਨਾਮ ਗੋਵਿੰਦਨ ਮੇਰਾ ਨੋ ਰਾਮ ਤੇ ਦੋ ਸਰ ਵੀ ਅਖਬਾਰਾਂ ਅੰਦਰ ਲਿਖਤੀ ਇਹਨਾਂ ਬੇਕਰਦ ਉਹ ਬੜਾ ਹੋਇਆ ਤਾਂ ਬਸ ਜੋ ਤਾਂ ਆਉ ਕਿਸ ਹੋ ਰੱਖ ਦਿੰਦੇ ਨਾ ਹੋ ਜੇ ਨਾਮ ਕੀ ਕੀ ਜਾਂ ਨਾਂ ਦੀ ਕੀ ਬਲੀ ਹੋਵੇ ਜਿਸ ਦਾ ਕੋਈ ਨਾਮ ਨਹੀਂ ਨਾਮ ਦਾ ਸਾਡਾ ਇੱਕ ਲਖਮ ਦਿੱਤਾ ਹੋਇਆ ਬੁੱਢਿਆ ਹੋਇਆ ਕਿਹ ਚੀਜ਼ ਦਾ ਕੋਈ ਨਾਮ ਹੁੰਦਾ ਹੀ ਤੇ ਸਾਡਾ ਮਨ ਆਇਆ ਆਪਣੇ ਬੋਲਚਾਲ ਸੁਣ ਨੂੰ ਆ ਕਹਿ ਦਿਆ ਕਰੋ ਇਹਨੂੰ ਆ ਕਹਿ ਦਿਆ ਕਰੋ ਜੇ ਕੁਝ ਕਹਾਵੇ ਕਾਹਨ ਸਮਝ ਇਹ ਤਾਂ ਜਾਦੇ ਨਾਮ ਤਾਂ ਕਹਿ ਹੋਵੇ ਨਾ ਜਿਹੜੇ ਇਹਦੇ ਵਿੱਚ ਹੋਣੀ ਕੋਈ ਮਰਲੀ ਚਾ ਉਹ ਗੁੜਾ ਦੇਦਾ ਹੱਥ ਰੋੜੀ ਜਾਂਦਾ ਸੀ ਕਹਿੰਦੇ ਆ ਗੁੜ ਫੜਾ ਦੇ ਕੱਲ ਹੋ ਰਹਾ ਜਾਂ ਕਹਿੰਦਾ ਮਠਾ ਫੜਾ ਦੇ ਕੱਲ ਹੋਵੇ ਇਹਨਾਂ ਜੇ ਕਹਿੰਦਾ ਨਾ ਮਠਾ ਫੜਾ ਦੇ ਚਾਹ ਜੀਨੀ ਫੜਾ ਦੇ ਚਾਹ ਪਤਾ ਫੜਾ ਦੇ ਚਾਹ ਗੁੜ ਫੜਾ ਦੇ ਚਾਹ ਬੂੜਾ ਫੜਾ ਦੇ ਚਾਹ 70 ਫੜਾ ਦੇ ਉਹਦੇ ਕੋਲ ਪਾਜ ਆਪਸਟ ਫੜਾਉਣ ਲੱਗੇ ਅਜਾ ਕਰਨਾ ਵੀ ਘੋੜ ਫੜਾ ਦੇ ਫਿਰ ਫਿਰ ਚਾਰੇ ਨਹੀਂ ਫੜਾ ਸਕਦਾ ਹੈ ਮਿੱਠਾ ਖਾਰਿਆਂ ਕਿ ਮਿੱਠਾ ਗੁਣਾ ਹੈ ਮਿੱਠਾ ਗੁਣਾ ਸਾਰਿਆਂ ਦਾ ਸਰਬਮਹ ਹੈ ਜਿਹੜਾ ਸਰਮਾ ਹੈ ਉਹ ਮਿੱਠਾ ਉਹ ਜਿਹੜਾ ਠੱਗਾ 라 ਉਹ ਕਬੂ ਨਹੀਂ ਆਇਆ ਕਦੈ ਨਾ ਉਹ ਦੂਰਾਂ ਸਾਧੀਆਂ ਮਿੱਠੇ ਦਾ ਨਾਉ ਨਹੀਂ ਉਹਦਾ ਚਿੱਤੀ ਮਿੱਠੇ ਦਾ ਨਾਉ ਨਹੀਂ ਹੈ মিঠা কাও মুলে এ গুণ কাও মুলে হুত্তাই না এ তো উঠা সচ্চা কও মুলে কইও মুলে উঠা সচ্চা दयालु কৃপালু ও তোয়ি সরকারি ঠিকারি লোভী এ গুণ অৰোপন বাছ কৰা운데 গুণ অৰোপন ਇੱਕ ਵਿਅਕਤੀ ਦਾ ਇੱਕ ਨਹੀਂ ਹੋ ਜਾਣਾ। ਇੱਥੇ ਆ। ਸਾਰੇ ਵਿਅਕਤੀ ਗੁਣ ਨਹੀਂ ਕਈ ਗੁਣ ਹੋ ਸਰਦਾ। ਕਈ ਗੁਣ ਜਿਨ੍ਹਾਂ ਆਉਕਰਣ ਐ ਉਹ ਤਾਂ 29 ਹੋ ਸਕਦੇ ਨੇ ਜਿਨ੍ਹਾਂ ਗੋੜਨੇ ਉਹਨਾਂ ਗੋੜ ਮੀਚੂ ਹੋ ਜਾਣਾ। ਮਾਇਆ ਧਾਰੀ ਸਾਰਿਆਂ ਬਾਦ ਸਬਚ ਹੋ ਗਿਆ। ਕੱਲੇ ਕੱਲੇ ਨਾ ਉਹ ਤਾਂ ਲੈ। ਉਹਨੂੰ ਕਿ ਉਹ ਸਮਝ ਗਈ ਆਈ ਸਮੁੱਚੇ ਦੌਰ ਤੇ ਗੱਲ ਆਦੀ ਉਹ ਦਨੋ ਗੁਣਵਾਚਕ ਇਹ ਆਉ ਗੁਣਵਾਚਕ ਹੋਕਰਵਾਚ ਉਹਨਾਂ ਦੇ ਵਿੱਚੋ ਗਿਆਨ ਦਾ ਪਤਾ ਲੱਗਦਾ ਹੈ ਕਿ ਚੀਜ਼ ਕੀ ਹੈ ਸੋ ਪੰਡਿਤ ਜੋ ਮਨ ਪ੍ਰਗੋਧ ਰਾਮ ਨਾਮ ਆਤਮ ਹੈ ਸੋ ਰਾਮ ਨਾਮ ਕੀਆ ਰਾਮਤਾ ਉਹਦਾ ਨਾਮ ਹੈ ਉਹ ਕੁਤ ਨਾਮ ਦਾ ਵੀ ਨਾਮ ਹੁੰਦਾ ਗਾ ਰਾਮ ਦਾ ਨਾਮ ਕੁਤ ਨਾਮ ਦਾ ਵੀ ਗਾ ਨਾਮ ਹੁੰਦਾ ਰਾਮ ਇੱਕ ਨਾਮ ਹੈ ਰਾਮ ਦਾ ਆਪਣੇ ਆਪ ਜਿਹਾ ਨਾਮ ਹੈ ਤੇ ਨਾਮ ਲਾਉਣ ਦੀ ਕੋਈ ਬੈਕੀ ਉਹ ਗਾ ਉਹਦੇ ਵਾਲੀ ਗੱਲ ਹੈ ਕੁਝ ਸਰਕਾਰ ਵਿੱਚ ਲੱਗ ਗਿਆ ਮੇਰਾ ਨਾਮ ਤਾਂ ਕੋਈ ਵਸਤੂ ਹੈ ਹੋ ਰਾਮ ਕੋਈ ਪਦਾਰਥ ਹੈ ਪਾਇੰਦਾ ਕੁਬੀਰਾ ਕਹਿੰਦਾ ਰਾਮ ਪਦਾਰਥ ਪਾਇਕ ਕੁਬੀਰਾ ਕਹਿੰਦਾ ਰਾਮ ਹੋਰ ਰਾਮ ਤੋਂ ਕੋਈ ਪਦਾਰਥ ਹੋਇਆ ਕਿਹਦੇ ਪਦਾਰਥ ਦਾ ਹੈ ਇਹ ਰਾਮ ਰਾਮ ਕੋਈ ਰਾਸ ਹੈ ਰਾਮ ਰਸ ਪੀਰੇ ਰਾਮ ਰਸ ਹੈ ਕੋਈ ਪਦਾਰਥ ਹੈ ਰਾਮ ਰਸ ਹੈ ਦੇ ਰਸਾ ਪਦਾਰਥ ਆ ਸੁਣ ਤੁ ਕਹਾਂਦਾ ਰਾਮ ਇੱਕ ਪਦਾਰਥ ਹੈ ਸਾ ਦੇਖੋ ਉਹਦਾ ਨਾਮ ਕੀ ਹੈ ਉਹਦੇ ਘੋੜ ਨਹੀਂ ਫਿਰ ਪਦਾਰਥ ਦੇ ਘੋੜ ਦੱਸਾਂ ਹੁਣ ਜੀ ਰਾਮ ਨਾਮ ਸਾਰ ਦਾਸ ਪੀਵੇ ਉਸ ਪੰਡਿਤ ਦੇ ਪੰਡਿਤ ਕੇ ਉਪਦੇਸ਼ ਜਗ ਜੀ ਰਾਮ ਨਾਮ ਦਾ ਇੱਕ ਸਾਰ ਰਸ ਸਾਰ ਰਸ ਪੀਵੇ ਤਾਂ ਰਸ ਹੈ ਰਾਮ ਦੁ ਜੋ ਸਾਰ ਹੈ ਸਾਰ ਗਿਆਨ ਹੈ ਸਾਰੇ ਟੋਟਲੇ ਗਿਆਨ ਦਾ ਜਿਹੜਾ ਚੇਤਨ ਦਾ ਜਿਹੜਾ ਗਿਆਨ ਕਿਹਾ ਉਹਦਾ ਸਾਰ ਹੈ ਇਹਦੇ ਵਿੱਚ ਸਾਰ ਕੱਢਣਾ ਅਸੀਂ ਵਿਚਾਰਨਾ ਜਿਹੜਾ ਚੇਤਨ ਤੇ ਦੋ ਗਿਆਨ ਦੇ ਵਿੱਚ ਤਿੰਨ ਲੋਕ ਜਿਹੜਾ ਚੇਤਨ ਸਮਾਏ ਹੋਏ ਨੇ ਇਹਨਾਂ ਲੋਕ ਦੇ ਅਸਲ ਜੜ ਵੀ ਹੈ ਚੇਤ ਦੀ ਜਦ ਦਾ ਗਿਆਨ ਵੀ ਸਾਨੂੰ ਵਿਚੇ ਦਿੱਤਾ ਗਿਆ ਤਾਂ ਉਹਦਾ ਇਹਦਾ ਜੋ ਸਾਰ ਕੱਢਣਾ ਅਸੀਂ ਵਿਚਾਰ ਕੇ ਉਹ ਰੌਂਗ ਲੋਕ ਉਹਦੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗ ਜੀਵੇ ਉਸ ਪੰਡਤ ਕੇ ਉਪਦੇਸ਼ ਜਗ ਜੀਵੇ ਉਹ ਜਗ ਨੂੰ ਜਿਉਂਦਾ ਰੱਖ ਸਕਦਾ ਹੈ ਜੀਵਨ ਮੁਕਤ ਅਵਸਥਾ ਉਹ ਬੋਧ ਤੋਂ ਬਚਾ ਸਕਦਾ ਹੈ ਉਹ ਇਹਨੂੰ ਅਮਰ ਕਰ ਸਕਦਾ ਹੈ ਸਰੀਰ ਤੋਂ ਬਾਅਦ ਵੀ ਇਹ ਜੁਗਨੇ ਹੀ ਰਹੂ ਫੇਰ ਇਹਨੂੰ ਜਨਮ ਲੈਣ ਦੀ ਲੋੜ ਨਹੀਂ ਹੈ ਜਾਨੁ ਪਦਾਰਥ ਮਿਲ ਜੂਏ ਨੂੰ ਜਿਹੋ ਜਹਾ ਪਰਮੇਸ਼ਰ ਹੈ ਉਹੋ ਜਾਈ ਵਜੂਏ ਹੈ ਪਰਮੇਸ਼ਰ ਇੱਕ ਬਾਗ ਹੈ ਸਾਚਾਂ ਇੱਕ ਬਾਗ ਹੈ ਜਿਹਦੇ ਵਿੱਚ ਭਗਤ ਰੂਪੀ ਸਭ ਪੇੜ ਡੈ ਤਰਵ ਰੂਪੀ ਰਾਮ ਨੇ ਉਹ RAM ਫਲ ਦਿੰਦੇ ਨੇ ਜਾਨ ਫਲ ਦਿੰਦਾ ਸਾਰਿਆਂ ਨੂੰ ਕਿ ਕੋਈ ਫਲ ਲੱਗਦਾ ਸਾਰਿਆਂ ਨੂੰ ਉਹੀ ਨਾਮ ਹੈ ਜਿਹੜਾ ਬੋਲਦਾ ਕੋਈ ਕੋਈ ਰਸ ਦਾ ਸਾਰ ਨਹੀਂ ਫੜ ਕੋਈ ਫਰਕ ਨਹੀਂ ਉਹ ਸਾਰਿਆਂ ਦਾ ਇਕੱਠਾ ਰਸ ਕੋਈ ਹੈ ਸਭ ਦੇ ਵਿੱਚ ਸਾਰਿਆਂ ਦਾ ਸਾਂਝਾ ਉਹ ਤੇ ਰਸ ਹੈ ਕੋਈ ਫਰਕ ਨਹੀਂ ਉਹ ਸਾਰ ਰਸ ਆ ਰਾਮ ਨਾਮ ਸਾਰ ਦਾ ਸਪੀਵੇ ਸਾਰੇ ਆਦੇ ਜਗ ਜੀਵਣਾ ਕੋਈ ਨਾ ਹੋ ਸਾਰੇ ਭਗਤਾਂ ਨੇ ਜੋ ਗੱਲ ਕਹੀ ਉਹਦਾ ਸਾਰ ਹੈ ਜੜਾ ਕੁਰਬਾਨੀ ਨਬੀ ਜੀ ਨੇ ਜਿਹੜੀ ਕਹੀ ਹੈ ਯਾਦ ਗੱਲ ਕਹੀ ਹੈ ਸਾਰਿਆਂ ਦਾ ਇਸਾਰ ਕੱਢ ਕੇ ਉਹ ਵੀ ਸਮਝੇ ਉਸ ਪੰਡਤ ਕੇ ਉਪਦੇਸ਼ ਜਗ ਜੀ ਉਹ ਜਿਹੜਾ ਪੰਡਤ ਆ ਉਹਦੇ ਉਪਦੇਸ਼ਾਂ ਔਰ ਜੀਵਨ ਹੁਕਮ ਤੋਂ ਉਸ ਦਾ ਪ੍ਰਾਪਤ ਹੋ ਗਿਆ ਕਿਤੇ ਸਾਰਿਆਂ ਦਾ ਤੋਂ ਹੈ ਸੋ ਪੰਡਤ ਫਿਰ ਜੋਨ ਨਾ ਆਵੇ ਹਰ ਕੀ ਕਥਾ ਗੁਰਬਾਣੀ ਹਰ ਕੀ ਕਥਾ ਹੰਦੇ ਬਸਾਵੇ ਹੰਦੇ ਜੀ ਕਥਾ ਬਸਾ ਲਵੇ ਸਾਰੀ ਗੱਲ ਹਰ ਕਥਾ ਹੰਦੇ ਬਸਾਵੇ ਸੋ ਪੰਡਤ ਨਾ ਸੋ ਪੰਡਤ ਫਿਰ ਜੋਨ ਨਾ ਆਵੇ ਕੋ ਨਹੀਂ ਕੋ ਮੂਰ ਸੂਖ ਨੂੰ ਮੇ ਜਾਣੇ ਅਸੂਖ ਬੇਜ ਐਸਾ ਕੋਮਲਾ ਹੈ ਨਾ ਫਿਰ ਜਲ ਬਣੂ ਪ੍ਰਾਣ ਪ੍ਰਾਣ ਸਮਰਤੀ ਯਾਦ ਕਰਦੇ ਬੇਜ ਪ੍ਰਾਣ ਸਮਰਤੀ ਬੁਝ ਜਾ ਹੋਰ ਪ੍ਰਾਣ ਸਿਰਫ ਨਿਚਾ ਪੂਰ ਬੇਜ ਜੇ ਬੇਜ ਨੂੰ ਸੂਰੀ ਪ੍ਰਾਣ ਦਾ ਦਾ ਬੂਲ ਬੁਝਣਾ ਗਲਤ ਗੱਲ ਹੋ ਗਈ ਬੂਲ ਦਾ ਸਭ ਦੇਰ ਪ੍ਰਾਨ ਦੇ ਮੂਲ ਵੇਦ ਨੂੰ ਉਜਲਵੇ ਜਿਹੜਾ ਉਜੇ ਮੂਲ ਸੁਖ ਵਿੱਚ ਝਾੜਿਆ ਸੁ ਆ ਜਿਹੜਾ ਸੁਖ ਹੁਣ ਹੈ ਆਲਾ ਸੂਲ ਆ ساری ਰਖਣਾ ਆਖ ਸਾਧ ਕਰ ਇਸ ਸੂਲ ਦੇ ਵਿੱਚ ਹੈ ਸੁਖ ਸਾਧਨ ਦੇ ਵਿੱਚ ਹੈ ਬਾਹਰ ਨਹੀਂ ਸੁਖ ਮਹਾਂ ਜਾਣੇ ਸੁਖਮੈ ਸੁਖ ਸਾਗਰ ਸੁਖ ਜਮਾਇ ਆਨੰਦ ਰੰਗ ਦੀ ਰਾਣੀ ਸਾਡੇ ਭਗਤੋਂ ਪਰੇ ਐ ਉਹ ਕੀ ਹੈ ਅਸੂਲ ਜੋ ਸਮਾਇ ਇਹ ਉਹਦੇ ਵਿਚਾਰ ਦੇ ਵਿੱਚ ਹੈ ਭਗਤ ਸਾਗਰ ਸੁਖ ਸਾਗਰ ਵਾਹਿਗੁਰੂ ਉਹ ਕੀ ਹੈ ਗਗਨਾ ਉਹਦਾ ਨਾਮ ਕਹਦਾ ਨਾ ਗਗਨਾ ਗਗਨਾ ਕਾਹੀ ਕਿਉਂ ਗਗਨ ਠੋਠੋਂ ਤਾਂ ਅਕਾਜ ਦੇ ਵਿੱਚ ਚੀਜ਼ ਕੋਈ ਘੁੰਮ ਸਕਦੀ ਹੈ ਮਾਇਓ ਉਹ ਜਮਾਇਆ ਦੀ ਕੋ ਬਲੋ ਜਿਹੜਾ ਛਿਓ ਨਹੀਂ ਨਾ ਮਾਰਿਆ ਜਿਸ ਪਾਸ ਘਾਲ ਜੀ ਉਹ ਏਰੀਆ ਸਾਡਾ ਹੈ ਸਮਾਇਆ ਦੋਸ਼ ਚਲੀ ਜੂ ਜਿਬ ਬਹੁਤ ਬੜਾ ਘੋੜਾ ਹੈ ਬਰਖਦਾ ਅਰਪਾਂ ਘਰਪਾਂ ਕੇ ਲੋਕ ਮੀਢੋ ਦਾ ਹੈ ਬੱਚਾ ਹਜ਼ਾਰ 2000 ਕਿਲੋਮੀਟਰ ਦਾ ਪਾਣੀ ਉਹਦੇ ਵਿਚਾਲੇ ਪਾਣੀ ਆ 5000 2000 ਕਿਲੋਮੀਟਰ ਦਾ ਕੋਈ ਕਾਬੂ ਨਹੀਂ 2000 ਕਿਲੋਮੀਟਰ ਦਾ ਜੇ ਆਪਾਂ ਪ੍ਰਕਾਰ ਤੋਂ ਮਾ ਜੀਏ 4000 ਦਾ ਹੋ ਗਿਆ ਉਹਦੇ ਆਲੇ ਪਾਣੀ ਹੈ ਪਾਣੀ ਬਿਜਲੀ ਬਣੇ ਹੋ ਜਾਂਦਾ ਆ ਰojana ਪਾਣੀ ਚ ਹੈ ਬੜੀ ਬਾਹਰ ਵਰਖਾ ਬਾਦ ਹੀ ਜਾਂਦੇ ਦੇ ਵਿਚੇ ਅੱਜ ਜਿੱਤੇ ਤੱਕ ਪਾਣੀ ਆ ਜਾਂਦੀ ਹੈ ਨਾ ਕੋਪਣਾਗੇ ਵੀ ਆ ਜਾਂਦੀ ਹੈ ਪਰ ਵੀ ਕਿਉਂ ਮੈਂ ਜਾਉਂ ਅੱਗੇ ਇੱਥੇ ਪਾਣੀ ਪਾਣੀ ਦਾ ਕਾਹਨਾ ਹਾਂ ਆ ਕੇ ਰੜੀ ਤਾਂ ਪਾਣੀ ਹੋਇਆ ਇਹ ਪਾਣੀ ਦਾ ਜੀਵ ਹੈ ਗਲਵਲੈਤ ਰਹਿੰਦਾ ਪਾਣੀ ਦੇ ਵਿੱਚ ਜੀ ਇਹ ਪਾਣੀ ਦੇ ਵਿੱਚ ਰਹਿੰਦਾ ਪਾਣੀ ਥੋੜੇ ਇਹ ਕਿਹਦਾ ਅਜ ਖੱਲੀ ਹੈ ਪਿਆ ਅਰੀਆ ਝੋਸ ਹੋ ਗਿਆ ਜੇ ਮੈਂ ਗੈਸ ਹੋ ਜਾਣਾ ਨਹੀਂ ਹੈ ਜੈਸੇ ਗੈਸ ਛੂਟੀ ਖੋਲ ਦੀ ਤੇ ਮੈਂ ਇੱਕ ਸਰਜਨ ਏਰੀਆ ਖਾਲੀ ਕੀਤਾ ਕਰਕੇ ਸਭ ਕੁਝ ਕੋਈ ਕੋਬੂਦਾ ਸਭ ਕੁਝ ਅਕਾ ਆਜੋ ਬਿੱਤੇ ਉਹ ਹੈ ਉਹ ਬਰਫ ਹੈ ਜਿਹੜਾ ਦਮਾਮਾ ਵਜਿਆ ਗਗਨ ਤੇ ਵਜਿਆ ਸੀ ਸ਼ੰਦਗੁਰੂ ਗਗਨ ਤੇ ਆਇਆ ਸੀ ਇਹ ਪੈਦਲ ਆ। ਉਹ ਟੱਪ ਬਜੂ ਕੋ ਸਾਂਹੇ ਆ ਜਾਉ। ਗਗਨ 'ਚ ਦਮਾਮਾ ਵਜਿਆ ਗਗਨ ਦੇ ਵਿੱਚੋਂ ਗਗਨ ਦੀ ਇੱਛਾ ਉਹ ਚੇਤਨਾ ਕੱਲ ਆਈ ਉੱਥੇ ਜੇ ਤੱਕ ਇਛਾਈ ਆਵਾਜ਼ ਤੋਂ ਕੀ ਹੋਣੀ ਸੀ ਉਹ ਰੱਬ ਤੋਂ ਹੋ ਗਈ ਉਹਦੇ ਕੋਲੋਂ ਹੋ ਰਹੀ ਜਾਨੀ ਉਹ ਤੇ ਕਹਿੰਦਾ ਕੰਨ ਸੁਣਨ ਵਾਲੀ ਆਵਾਜ਼ ਆ ਉਹ ਕਹਿੰਦਾ ਕਹੋ ਪ੍ਰਗਟ ਹੋਇਆ ਉਹ ਤੋਂ ਬੋਰਨਾ ਵਾਲੇ ਨੂੰ ਆਇਆ ਇਹ ਵੀ ਇਹ ਵੀ ਕਹਿੰਦਾ ਤੇ ਜਾ ਕੇ ਗਰਾਂ ਨਾਲੇ ਜੁੜੀ ਫਟਾ ਇਹ ਵੀ ਉੱਥੇ ਜਾ ਇਹਦੀ ਸੋਚ ਲਾਗੀ ਨਾ ਫਲਾਕ ਨਾਲ ਸੋਚ ਲਾਗੀ ਜਿਹੜਾ ਜੁੜਦਾ ਉਹ ਬਗੜਾ ਹੁੰਦਾ ਲੱਗਿਆ ਇਹਦੀ ਸੋਚ ਲਾਗੀ ਜਿਹਨਾਂ ਸੋਚ ਲਾਗੀ ਉਹਦੇ ਦਵਾਪਾਂ ਸੁਣ ਗਿਆ ਜਿਹਦੇ ਨਹੀਂ ਰੱਖੀ ਜੀ ਸਭ ਪਰਿਆਨਿ ਸ਼ਾਨਾ ਕਹੋ ਕਿਸੇ ਤੋਂ ਮਾੜੇ ਦੂਰੋਂ ਆਪੀ ਚੇਤਨ ਦੋਤੋ ਤਾਂ ਗਿਆ ਚੱਚਾ ਤਾਂ ਕੋਈ ਫੈਨ ਨਹੀਂ ਚੱਚਾ ਪਹਿਲਾਂ ਜੇ ਕੋਈ ਵੀ ਵਿਚਾਲੇ ਹੀ ਰਹਿ ਜਾਂਦੀ ਜਦ ਜਾਨੋਂ ਦਾ ਮਿਗੁਰਾਉ ਦਾ ਨਿਕੋਸੀ ਦਾ ਗਾਲੀ ਦਾ ਚੱਪ ਚਾ ਜੀ ਸੀ ਰੋਜ ਵਿਜਾਲੇ ਰਹ ਜਾਂਦੀ ਜਿੱਤਾ ਹਾ ਪਿੱਛੇ ਕੋਣ ਕਾਵੇਂ ਬੋਲਦਾ ਕਦਾ ਜੋ ਮਾਰਦੇ ਹਾਂ ਸੁ ਆਜੂ ਹੁੰਦਾ ਨਾ ਜਦੋਂ ਜਦ ਇਨਸਾਨੇ ਸੋਚੀ ਉਤਲੀ ਸਾਰੀ ਆ ਗਈ ਇਹਦਾ ਸਭ ਕੋ ਇਨਾਂ ਨੇ ਬਦਲਿਆ ਹੋਇਆ ਅਰਥ ਚੇਤਨਾ ਜਦਿਆ ਲਗ ਬੋਲਦਾ ਦਾ ਚੇਤਨਾ ਕਹਿੰਦਾ ਮੇਰਾ ਬਾਪਾ ਬਾਪਾ ਦਾ ਸਰੀਰ ਦਾ ਇਹ ਮੰਨਦੀ ਵਰਤਾ ਬੋਲਨ ਵਾਲਾ ਦੂਰ ਕਦੇ ਸ਼ਬਦ ਭੇਜ ਜਾਣ ਲਿਆ ਬੋਲਦਾ ਕੋਈ ਹੋਰ ਹੈ ਬਾਪ ਕਿਸੇ ਹੋਰ ਦਾ ਬੁੱਧੀ ਵਿੱਚ ਬਾਪ ਦਾ ਸਰੀਰ ਦਾ ਬੁੱਧੀ ਵਿੱਚ ਬੋਲਦਾ ਸਰੀਰ ਹੈ ਦੀ ਇਸ ਸ਼ਬਦ ਤੇ ਇਸ ਸ਼ਬਦ ਤੇ ਬੋਲਨ ਦੇ ਤੇ ਉਹਦੇ ਵਿੱਚ ਫਸੇ ਨਾ ਸਾਰੇ ਆਰ ਦਬਾਲ ਲਈ ਕਰੀਏ ਸ਼ਬਦ ਤੇ ਜਾਨੇ ਜਾਣਾਈ ਸ਼ਬਦ ਤੇ ਕੋਣ ਹੈ ਸਮਝਉਂਦਾ ਸੋਚ ਲੱਗ ਜਾਂਦੀ ਤਾਂ ਸਮਝ ਆ ਜਾਂਦਾ ਸੋਚ ਲੈ ਬਲ ਬਲ ਹੋਈ ਕੀ ਹੋ ਜਾਂਦਾ ਫਿਰ ਦਵਾ ਦਾ ਸਾਰਾ ਲੋਹਾ ਚੱਕ ਲੈਂਦਾ ਮੈਂ ਮੈਂ ਬੜਨਦਾ ਹੁੰਦਾ ਹੀ ਜੇ ਸੋਚ ਆਉਂ ਫਿਰ ਛੱਡ ਦਿੰਦਾ ਉਸੇ ਫਿਰ ਕੀ ਹੋ ਜਾਂਦਾ ਉਹੀ ਛੱਡ ਦਿੰਦਾ ਉਹੀ ਦੋ ਘਰ ਮਾਲ ਚੱਕਦਾ ਤਾਂ ਉਹੀ ਪਾਈ ਆ ਚੱਕਦਾ ਫਿਰ ਸਾਧ ਕੇ ਉਹ ਸੱਚੀ ਹੋਈ ਆ ਨਾ ਪਰ ਜਿਹੜੀ ਜੁੜ ਗਈ ਤਾਂ ਅਜੀ ਦੀ ਉਹਦੇ ਕੋਲ ਤਾਕਤਾਂ ਨਹੀਂ ਜੀ ਨਹੀਂ ਜੁੜੀ ਨਹੀਂ ਆਈ ਫੁਰਤ ਨੂੰ ਸਮਝ ਕਿਵੇਂ ਆਉਣੀ ਸਮਝ ਕੇ ਆਉਣੀ ਜਿਹਦੇ ਦੇਵਤਾ ਜੁੜ ਗਈ ਉਹਦੀ ਸਮਝ ਆ ਗਈ ਜੀ ਨਹੀਂ ਜੁੜੀ ਨਹੀਂ ਸਮਝ ਆਈ ਇਹ ਤਾਂ ਕਰਦੇ ਨਹੀਂ ਪਰਦੇ ਨੇ ਆਪਣੀ ਬੁੱਧੀ ਦੇ ਲੈਵਲ ਤੇ ਉਹ ਤੋਂ ਬਦੌਣ ਵਾਸਤੇ ਇਹ ਗੁਰਬਾਣੀ ਤੋਂ ਜੇ ਪੜੀਏ ਉਹ ਤੋਂ ਫੇਰ ਵਧੀਏ ਸਮਝ ਆ ਪਈ ਜਲਦੀ ਜਾਂਦੇ ਗੁਰੂ ਕਾ ਦਾ ਹੈ ਸਮਝਣਾ ਇਹਨੂੰ ਸਪਨਨ ਦੀ ਲੋੜ ਨਹੀਂ ਇਹ ਤਾਂ ਸਮਝਣ ਦੀ ਲੋੜ ਹੈ ਇਹਨੂੰ ਸਪਨਨ ਦੀ ਲੋੜ ਨਹੀਂ ਇਹ ਤਾਂ ਸਮਝਣ ਦੀ ਲੋੜ ਹੈ ਗੁਰਬਾਣੀ ਤੋਂ ਸਮਝਣਾ ਅਸਲੀ ਗੁਰਬਾਣੀ ਨੂੰ ਸਮਝਣ ਲੱਗੋ ਸਭ ਸੇ ਕੀ ਕਰਨਾ ਗੁਰਬਾਣੀ 'ਚ ਕਾਖਲ ਹੈ ਨਰੋਲ ਅਕਲ ਹੈ ਆਪਣੀ ਅਕਲ ਨਾਲ ਵੱਡੀ ਅਕਲ ਨਹੀਂ ਸਮਝਉਂਦੀ ਹੁੰਦੀ ਸਮਝਉਂਦੀ ਛੋਟੇ ਪਾਂਡੇ 'ਚ ਵੱਡਾ ਪਾਂਡਾ ਪੈਦਾ ਹੀ ਨਹੀਂ ਹੁੰਦਾ ਇਹਦਾ ਉਹਨੂੰ ਵੱਡਾ ਗੱਲ ਨਾ ਪੈਂਦਾ ਆਪਣੇ ਪਾਂਡੇ ਨੂੰ ਆਪਣੇ ਪਾਂਡੇ ਨਾਲ ਵੱਡਾ ਗੱਲ ਨਾ ਪੈਂਦਾ ਵੱਡੇ ਪਾਂਡੇ ਦਾ ਪਿਆਰ ਤੇ ਛੋਟੇ ਪਾਂਡੇ 'ਚ ਪੈਂਦਾ ਨਹੀਂ ਸਮਝਾਉਂਦਾ ਨਹੀਂ ਉਹਦਾ ਸਾਰਾ ਜੇ ਨਾ ਰੁਕਣਾ ਹੋ ਉਹ ਨਾ ਬਾਜੂ ਬਤੀ ਰਹੇ ਜੇ ਕਿ ਸਾਡੀ ਬੁੱਧੀ ਹੈ ਉਸਨੇ ਸਭ ਚਾਲ ਜੂ ਬਤੀ ਰਹੇ ਆਖੇ ਤਾਂ ਦੋ ਦੁਨੀ ਸਾਰਾ ਪਰਦਾੰਗੇ ਬਸ ਹੀ ਡੁੱਲੇ ਜਾਣ ਉਲਟਾ ਹੀ ਬਾਡਾ ਹੋਵੇ ਸਾਰਾ ਹੀ ਉਹ ਚਾਜੇ ਡੁੱਲੇ ਜਾ ਫਿਰ ਤਸਦੀ ਹੁੰਦੀ ਫਿਰ ਉਦਨਾ ਹੀ ਰੂਹੇ ਕੋ ਪਹੁੰਚੀ ਉਹ ਦੂਹੇ ਕੋ ਕਹਨਾ ਪਹੁੰਚਣਾ ਪਾਇਆ ਸੀ ਕੁਰਬਾਨੀ ਜਿਹੜੇ ਵੱਡੇ ਭਾਂਡੇ ਵਾਲੇ ਨੇ ਸਾਡੇ ਕੋਲ ਇਹਨਾਂ ਨੇ ਭਾਂਡੇ ਉੱਪਰ ਚਾਰਕਲੇ ਇਨੋ ਦੇ ਦੇਂਦਾ ਫਾਕੀਓ ਵਿਚਾਰੇ ਕਰਨ ਉਹਨਾਂ ਦੀ ਤਸੱਲੀ ਨਹੀਂ ਹੁੰਦੀ ਉਹਨਾਂ ਨੇ ਉਹ ਨਿਕੋ ਚਲੇ ਗਿਆ ਕੁਝ ਛੋੜ ਚਾਹੀਦਾ ਕੁਛੇ ਚਾਹੀਦਾ ਕੁਝ ਛੋੜ ਚਾਹੀਦਾ ਐਜੇ ਕੁਛ ਹੈ ਉਹ ਇਹਨੂੰ ਗੌਰ ਨਹੀਂ ਪੜਿਆ ਸੋ ਪੰਡਤ ਜੋ ਮਨ ਪਰਬੁੱਧ ਵਾਲੀ ਇਹ ਗੱਲ ਪੜ ਲੰਗੇ ਕਾਸ਼ੀ ਦੇ ਪੰਡਤ ਛੱਡ ਕੇ ਉਹ ਤਾਂ ਠੀਕਾ ਨਹੀਂ ਸੀ ਕਰਾਂ ਤੇ ਉਹ ਪੰਡਤ ਜਿਹੜਾ ਨਨ ਕਰ ਉਹ ਕਾਸ਼ੀ ਦੇ ਪੰਡਤ ਜੇ ਜਿਹੜੇ ਕਾਸ਼ੀ ਦੇ ਪੰਡਤ ਤੇ ਜਿਹਨੂੰ ਮੂਰਖ ਪੰਡਤ ਕਿਹਾ ਹੋਇਆ ਉਹ ਤਾਂ ਠੀਕਾ ਨਹੀਂ ਸੀ ਕਰਾਂ ਤੇ ਬੂਰਖ ਪੰਡਤ ਹੈਕਮਤ ਹੁਜਤ ਅਲਗੋਨਾ ਨਾ ਕਾਜਾ ਸੰਜੇ ਤੇ ਰੇਪਿਆ ਉਹ ਤਾਂ ਠੀਕਾ ਕਰਾ ਰਹੇ ਨੇ ਗੁਰੂ ਕਰਾ ਰਹੇ ਨੇ ਕਿਉਂਕਿ ਜਿਹੜੇ ਗੁਰੂ ਘਰ ਦੇ ਗੁਰੂਆਂ ਦੇ ਵਿਰੁੱਧ ਸੀ پوری ਮਤਦਾ ਇਹਦੇ ਤੇ ਪਹਿਲਾ ਜੇ ਪ੍ਰਚਾਰ ਰਹਿ ਸੀ ਬਿਨਾ ਰਾਮ ਦੇ ਲਈ ਧੀਰ ਮੰਡੀ ਜੇ ਸੀਦਾ ਉਹ ਹੀ ਕਰਾ ਰਹੇ ਸੀ ਉਹ ਦੋ ਰਹੇ ਸੀ ਉਹ ਤਾਂ ਆਪਣੇ ਮਤ ਉਹਦੀ ਜਸਰਾ ਰਹੇ ਸੀ ਉਹ ਨਾਲ ਦੇਵੇਂ ਸਾਧਗੁਰੂ ਉਹਨਾਂ ਤੋਂ ਬੁੱਤੇ ਬਿਜੇ ਕਾਸੀ ਪੜ੍ਹਵਾਸ ਤੇ ਉਹਨਾਂ ਕੋਲ ਦੇ ਹੈ ਨੀ ਗੁਰੂ ਘਰ ਤੋਂ ਗੁਰੂ ਗੋਬਿੰਦ ਸਿੰਘ ਜੀ ਪੜ੍ਹ ਗਿਆ ਸੀ ਕੜਿਕਾਸੀ ਪੜ੍ਹ ਗਿਆ ਸੀ ਗੁਰੂ ਅਕਾਲ ਦੇ ਕੜਿਕਾਸੀ ਪੜ੍ਹ ਗਿਆ ਸੀ ਉਹ ਨਾਨਕ ਕੜਿਕਾਸੀ ਪੜ੍ਹ ਗਿਆ ਸੀ ਸਭ ਸਸਾਰੇ ਤਾਂ ਹੀ ਬੜੇ ਬੱਛੇ ਨੇ ਕਿਤੇ ਇਹ ਕਦੇ ਪਲਟਣ ਦੇਣਾ ਨਾ ਗੱਲਾਂ ਮੈਂ ਤਾਂ ਇੱਥੋਂ ਨਾ ਪ੍ਰਚਾਰ ਕਰੋ ਇਹ ਉਦੋਂ ਪ੍ਰਚਾਰ ਕਰੋ ਜਦੋਂ ਫਲ ਜੂ ਬਾਹਰ ਕੋਈ ਪ੍ਰਚਾਰ ਕਰਦਾ ਉਹ ਅਗਲਾ ਕੋਨਾ ਨੂੰ ਅੰਦੂਕ ਉਹ ਇਹ ਸਮਝਦੇ ਲੇਕਿਨ ਤੇਰਾ ਸੁਣ ਲੂਗਾ ਉਹ ਤਾਂ ਬੁਤਵਾ ਨਾ ਤੁਹਾਡੇ ਨੂੰ ਜੰਮੇ ਜਦ ਸਾਰੀ ਸਾਜਿਕਾ ਪਾਲ ਗਲੂਗਾ ਪਾਣੀ ਇਕੱਠਾ ਹੋ ਗਏ ਤੇਰਾ ਮਾਰ ਕਰਦਾ ਤਾਂ ਫਿਰ ਜੇ ਤੂੰ ਜੀ ਰੋਕ ਕੇ ਰੱਖਿਆ ਨਾ ਪਿਆ ਸਾਦ ਜਿੱਦਾਂ ਟੁੱਟੂ ਦਾ ਪਾਣੀ ਇਕੱਠਾ ਹੋਇਆ ਵਾ ਨਾ ਸਾਫ ਕਰਕੇ ਵੀ ਲੈ ਜੀ ਸਭ ਕੁਝ ਰੋਕਿਆ ਕੀ ਰੋਕਿਆ ਮੋੜੇ ਘੜੇ ਹੋ ਜਾਣਗੇ ਕੰਕ ਸਾਰੇ ਬੇਦਵਾਨੀ ਆਏ ਬੇਦਵਾਨੀ ਮੈਂ ਅੰਦਰ ਗਏ ਚਲੇ ਹੋਏ ਬੇਦਪਰਾਣ ਸਪਲਤੀ ਬੁਝੇ ਮੂਲ ਬੇਦ ਪ੍ਰਾਣ ਸਿਮਰਤੀ ਦੇਦ ਪ੍ਰਾਣ ਸਿਮਰਤੀ ਬੁੱਝੇ ਮੂਲ ਸਤਮੇ ਜਨ ਪ੍ਰਾਣ ਹੋਰ ਸਿਮਰਤੀ ਦੁ ਪ੍ਰਾਣ ਹੋਰ ਸਿਮਰਤੀਆਂ ਨੂੰ ਦਾ ਗੂੜ ਪ੍ਰਾਣ ਹੋਰ ਸਿਮਰਤੀਆਂ ਦਾ ਮੂਲ ਬੇਦ ਰੂਪ ਜੇ ਬੇਦ ਚੋਂ ਨਿਕਲਿਆ ਨੇ ਬੇਦ ਦੀ ਪੁੱਤਰੀ ਸਿਮਰਤੀ ਭਾਈ ਇਹ ਉੱਥੋਂ ਨਿਕਲ ਗਈਆਂ ਹੋਈਆਂ ਨੇ ਉਹਦੇ ਨਾਲ ਇਹਨਾਂ ਨੂੰ ਜੁੱਤ ਕਰਨਾ ਇਹਦੇ ਨਾਲ ਉਹਨਾਂ ਨੂੰ ਨਹੀਂ ਬਗਾੜਨਾ ਸਿਪਰ ਕਿਹਾ ਹੈ ਬਗਾੜਿਆ ਗਿਆਨ ਨੂੰ ਵੇਦ ਵਾਲਾ ਅਰਥ ਬਦਲ ਲਿਆ ਉਹ ਸਮਝੀਆਂ ਵਾਲੇ ਅਰਥ ਗੁਰਬਾਣੀ ਦੇ ਅਸਲ ਅਰਥ ਬਣਤਾ ਸੀ ਫਿਰ ਉਹ ਸਿੱਖੀ ਇਹਨਾਂ ਨੇ ਕੀਤਾ ਪੜ੍ਹਦੇ ਕਰ ਸਕਦੇ ਸੀ ਪੜ੍ਹ ਤਨ ਦਾ ਪੰਡਤ ਚਾਰਾਸਨ ਨੂੰ ਰੋਕ ਤੋਬ ਜੇ ਸਿਕਾ ਬਣਿਆ ਪਰਣ ਤਕ ਮੇਰਾ ਇਹ ਭਾਈ ਸਿਕਾ ਬਣਿਆ ਸਪੈਟ ਤਕ ਮੇਰਾ ਇਹ ਜੇ ਸੰਗ ਨਹੀਂ ਹੈ ਜੇ ਪੰਡਤ ਜੀ ਆ ਰਿਹਾ ਸੰਗ ਜੇ ਸੰਗ ਬਿਨਾਂ ਤੂੰ ਪੜਾ ਤੂੰ ਨਿਆ ਰੋਕ ਮਾਉਗੇ ਜਮਾ ਦੇ ਕੋ ਦਾ ਪੜਦਾ ਕਹੂਦਾ ਜਾਇਆ ਉਹ ਤਾਂ ਗੋਉ ਪੁੱਤਾਂ ਤੇ ਆਇਆ ਗੋ ਬਾਂਝਾ ਸਤਰਾਣ ਉਹ ਤਾਂ ਅਲੱਗ ਨੇ ਸਾਧਾ ਕਰੀਓਲਾ ਉਹ ਨੂੰ ਮਾਧਵਨਾਂ ਵਾਲੇ ਉਹ ਤਾਂ ਅਲੱਗ ਨੇ ਜਿਹੜਾ ਵੰਗਾਈ ਦੀ ਗੋਵਰਨ ਮਾਤਾ ਸੰਸਾਰ ਆਰਥਕ ਸੀ ਉਹ ਤਾਂ ਇਹ ਵੀ ਹੋ ਰਿਹਾ ਮਤਲਬ ਰੌਣਕ ਸੋਧਦਾ ਇਹਨਾਂ ਨੂੰ ਪਹਿਲਾਂ ਦੇ ਦੇ ਪਹਿਲਾਂ ਪਤਾ ਕਰਦੇ ਗਾ ਮਹਿਰਮਾਨਾਂ ਨਾਲ ਉਹ ਹੋਣਾ ਹੈ ਜੀ ਆਹੀ ਹੈ ਉਹ ਹੀ ਚੀਜ਼ ਹੈ ਠੀਕਾ ਕਿਤੇ ਜਿੱਤ ਨਹੀਂ ਗੱਲ ਆ ਠੀਕਾ ਜੇ ਹੁੰਦਾ ਫਿਰ ਪੜ੍ਹਦੇ ਕਿਉਂ ਕਰੋਗੇ ਸਾਬੋਦੇ ਨਾ ਜਿੱਤੇ ਵੀ ਲਿਖਣ ਵਾਲੇ ਸੀ ਜਿੱਤੇ ਵੀ ਲਿਖਣ ਆਏ ਸੀ ਕਿਆ ਤਾਂ ਮੁਸਲਮਾਨਾਂ ਦੇ ਲਿਖਾਇਨੇ ਆਂਗਰੇਜ਼ਾਂ ਨੇ ਦਿਖਾਇਆ ਮੁਸਲਮਾਨ ਵੇਲੇ ਤੇ ਨਹੀਂ ਲਿਖੰਦਾ ਮੁਸਲਮਾਨਾਂ ਨੇ ਇਹ ਨੀਕਾ ਬਗਲ ਨਾ ਤਾਂ ਵੀ ਤੁਹਾਡਾ ਇਤਿਹਾਸ ਹੈ ਕੀਕਾ ਜਲੀ ਕਰਦਾ ਕੋਈ ਦੋਹਰੇ ਜਲੇ ਬੜਕੋ ਨਹੀਂ ਕਰ ਸਕਦਾ ਇਹ ਮੁਸਲਮਾਨ ਵੇਲੇ ਹੋਇਆ ਤਾਂ ਕਿਉਂ ਇਹ ਤੁਹਾਨੂੰ ਆਲਾ ਨਹੀਂ ਮਦਰ ਨਾ ਹੋਇਆ ਨਾ ਮੁਸਲਮਾਨਾਂ ਦਾ ਰਾਜ ਕੋਣੋਂ ਰਾਜੇ ਦਾ ਕੋਣ ਬੁਖੀਪਾਤੀ ਨਾ ਗੱਲ ਇਹ ਕਰੋ ਸੀ ਜਿਹੜਾ ਹੈ ਹੈਗਾ ਕੋਈ ਚਾਹਤਾ ਨਾ ਵੀ ਆਪਾਂ ਰੌਣਕ ਦੇ ਰਾਜ ਕਰ ਸਕੀਏ ਵੀ ਆਪਣਾ ਤੇ ਕੋਈ ਰਾਜ ਨਹੀਂ ਆ ਬੁਰਾ ਫੇਰਾ ਬੀ ਜੇ ਹੰਦੂ ਨਾ ਤੁਰਕੂ ਕਾਣਾ ਤੋਂ ਆਉਟੋ ਗਿਆਨੀ ਸਿਆਣਾ ਮੜ ਕਾਣਾ আর ਸਿਆਣਾ ਜੇ ਤੱਕਠੇ ਹੋਗੇ ਖਟਰਾ ਸੀ ਕਾਣਾ ਸਿਆਣਾ ਨਾ ਕਠੇ ਹੋ ਜਾਣ ਕਾਣੇ ਤਾਂ ਸਿਆਣਾ ਬਾਲ ਨੂੰ ਆਉਣਾ ਨਾ ਸਿਆਣਾ ਨੇ ਹੋਈ ਫਿਰਦੇ ਨੇ ਕਹਿੰਦਾ ਸਿਆਣਿਆਂ ਵਾਲੂ ਕਹਿੰਦੇ ਨੇ ਜਾਨੀ ਅਵਲ ਤੋਂ ਅਧੀ ਕਰੇ ਜਾਈਏ ਜਿਹੜੇ ਜਾਣੇ ਸਿਆਣੇ ਕਹਿੰਦੇ ਉਹ ਨਹੀਂ ਕਰਦੇ ਉਹਨਾਂ ਨੇ ਆਪਣੇ ਨਾਲ ਉਹਨਾਂ ਦੇ ਅੱਖਾਂ ਵੀ ਕੋਈ ਨਹੀਂ ਤਾਂ ਅੱਗੇ ਹਾਜ਼ੀ ਮਿਓ ਸੀ ਕਹਿੰਨਾ ਬੇ ਦੇਖੋ ਆਈਏ ਦੋ ਅੱਖਾਂ ਘਾਲੋ ਤੁਸੀਂ ਉਹ ਆਇਆ ਇੱਕ ਆ ਆਪਣੇ ਦੋ ਹੋ ਜਾਣ ਤੁਸੀਂ ਕਹਿੰਦੇ ਵੀ ਥੋੜੀਆਂ ਵੀ ਦੋਏ ਭਰਦੀਆਂ ਅੱਖਾਂ ਦਾ ਮਾਸ ਫੇਰ ਉਹਨੂੰ ਕਹਾਣੀ ਸੁਣਾ ਦੇ ਥੋੜੇ ਨੂੰ ਕਾਂ ਕੇ ਹਾਜ਼ੀਬੋ ਫਰਕਾਨਿਆਂ ਨਾਲ ਖੜਿਆ ਸੀ ਤੁਹਾਡੇ ਨਾਲ ਨਹੀਂ ਖੜਿਆ ਸੀ ਛੋਟੇ ਵੀ ਇਹਨਾਂ ਦੇ ਵੀਰ ਨੇ ਸਭ ਕਾਂਣੇ ਜੰਦੇ ਨੇ ਏ ਕੱਖ ਰਖਣੀ ਹੈ ਕਰਫਾ ਦੂਈ ਜੀ ਨਾਲ ਕਾਦੀਆਂ ਕਰਾ ਲੋਏ ਦੂਈ ਜੀ ਨਾਲ ਜਿੱਦੂ ਦੂਈ ਜੀ ਲੋੜਾ ਲੈ ਲਵੇ ਨਹੀਂ ਇੱਕ ਨਾਲ ਵੀ ਕੰਮ ਸਰਦਾ ਜਿਹੜਾ ਇੱਕ ਨਾਲ ਸਰਦਾ ਸਾਰੀ ਗੱਲ ਅੰਨਾਂ ਨੂੰ ਫਿਰ ਜਰਨਰ ਅਨਨੂਰੀ ਉਹ ਕਾ ਦਾ ਵਾਂਗੇ ਦੋ ਜਾਨੇ ਨਹੀਂ ਆਉਂਦੇ ਕਾਲੇ ਨੂੰ ਉਹਦਾ ਉਹ ਮੈਂ ਇਕੱਲਾ ਆ ਜੂਗਾ ਅਨਨੂਰੀ ਉਹ ਕਾ ਦਾ ਦੋ ਜਾਨੇ ਆਉਂਦੇ ਦੇਖੋ ਇਕਲਾ ਦੀ ਬਰਕੇ ਰਵਗੋਰੀ ਅਨਨੂਰੀ ਉਹਦਾ ਦੋ ਹੋਣਗੇ ਬੋਲਦਾ ਹੈ ਬੇਦ ਪ੍ਰਾਣ ਸਿਮਰਤੀ ਗੁੱਜੇ ਮੂਲ ਦੇਖੋ ਬੇਦ ਪ੍ਰਾਣ ਸਿਮਰਤੀ ਗੁੱਜੇ ਮੂਲ ਮੂਲ ਬੇਦ ਹੈ ਰੁਖੋਂ ਮੇ ਜਾਣੇ ਅਸੂਲ ਸਿਪਰਤੀ আর ਪ੍ਰਾਣ ਦਾ ਬੇ ਜਿਹੜਾ ਹੈ ਮੂਲ ਬੇਦ ਹੈ ਇਹ ਕਰਕੇ ਸੋਤੇ ਸਿਮਰਤ ਅਸਤਰ ਸਫਲ ਸਿਪਰਤ ਪਹਿਲਾਂ ਅਸਤਰ ਬਾਅਦ ਪੜ੍ਹਨਾ ਸਿਮਰਤੀ ਪਹਿਲਾਂ ਅਸਤਰ ਬਾਅਦ ਪੜ੍ਹਨਾ ਜੇ ਮੰਦੀ ਦਾ ਆਉਸ਼ਾ ਤੇ ਪਿੱਛੋਂ ਸੁਪਰ ਤੇ ਸ਼ਾਸਤਰ ਕੋਠਾ ਪਾਪ ਸਮਝੀ ਗੱਲ ਹੈ ਸੁਪਰ ਕੀ ਕਪਤਾ ਚ ਉਹ ਤਾਂ ਪਹਿਲਾਂ ਦੇ ਸ਼ਾਸਤਰ ਦੋਈ ਭਾਸ਼ਾ ਚ ਸੁਪਰ ਦੀ ਭਾਸ਼ਾ ਫਿਰਦੀ ਹੈ ਸਦ ਸਿਰ ਤੇ ਸ਼ਾਸਤਰ ਦੀ ਭਾਸ਼ਾ ਹੁੰਦੀ ਹੈ ਉਹ ਵੀ ਹੈ ਪਰ ਭਾਸ਼ਾ ਬਦਲੀ ਹੋ ਜਾਂਦੀ ਹੈ ਸਰਕਾਰੀ ਭਾਸ਼ਾ ਹੈ ਇਹ ਭੇਦ ਭੂਲ ਹੈ ਇਹਨਾਂ ਦੋਹਾਂ ਦਾ ਕਹਿੰਗੇ ਭੇਦ ਕਤੇਬ ਕਹੋ ਮੱਤ ਝੂਠੇ ਬਤੇ ਵਾਲੇ ਕਾਹਨੇ ਨੇ ਭੇਦ ਵਾਲੇ ਦੋ ਖਾਨੇ ਭੇਦ ਵਿੱਚ ਦੋ ਖਾਨਾ ਗਿਆਨ ਕੋਈ ਰੋੜਾ ਨਹੀਂ ਪਰ ਕਤੇਬ ਵਿੱਚ ਵੀ ਅੱਦਾ ਗਿਆਨ ਸੱਜਾ ਅੱਦਾ ਕਿ ਅੱਦਾ ਅੱਦੇ ਦਾ ਗਿਆਨ ਹੈ ਨਹੀਂ ਅੱਦੇ ਦਾ ਗਿਆਨ ਹੈ ਉਹਨਾਂ ਤੂੰ ਕਾਹ ਨਹੀਂ ਉਹਨਾਂ ਦਾ ਮਾਇਆ ਦੀ ਮੱਦ ਦੇ ਉਹ ਸਿਰੇ ਪੂਜਾ ਕਰਦੇ ਅਗਿਆਨ ਅਤੇਵਾਰੇ ਅਖਾਯੋ ਅਤੇਵਾਰੇ ਖੁਚੀ ਹੋ ਜਾਣਾ ਅਤੇਵਾਰੇ ਪਤਾ ਦੇਵਾਰੇ ਖੁਚੀ ਹੋ ਬੇਦਦਮ ਹੂਲੇ ਇਹ ਕਰਕੇ ਕਲਮਾ ਬੇਦ ਅਥਰਵਨ ਹੋ ਆ ਦੋ ਖਦਾਈ ਲੋਪਾ ਨੀਲ ਵਰਸਨ ਲੈ ਕਪੜੇ ਪਾੜੇ ਤੁਰਕ ਪਸ਼ਤਾਨੀ ਤੁਮ ਰਕੀ ਹੇ ਵੀ ਵੇਦ ਵਿੱਚ ਹੁੰਦੀ ਉਹ ਅਸੀਂ ਵੀ ਅਸੀਂ ਪੁੱਛਿਆ ਨਾ ਸਾਡੇ ਕੋਲ ਉਹ ਨਾ ਕੋ ਅਧੂਰਾ ਇਹਨਾਂ ਕੋਲ ਇਹਨਾਂ ਨੇ ਬਿਲਕੁਲ त्यागਤਾ ਇਹਨਾਂ ਨੇ ਬਿਲਕੁਲ ਤਿਆਗਤਾ ਸੀ ਫਟਤਾ ਨੇ ਉਹ ਪੜ੍ਹਦੇ ਆਂਦੇ ਵੀ ਇਹਦਾ ਵੀ ਗਿਆਨ ਕਿਸ ਤਰੀਕੇ ਨਾਲ ਸਿੱਖ ਤਿਆਗ ਦੇਣਾ ਤਾਂ ਆਂਦੇ ਤੇ ਲਿਖਿਆ ਹੋਇਆ ਸਾਰੇ ਸਾਧੂ ਸਭ ਕੂੜ ਗੱਲ ਨਹੀਂ ਹੋਣੀ ਤੱਕ ਕੁਛ ਲਿਖੇ ਦੇ باوجود ਜਾਨ ਬੁਟਕੇ ਕਰਕੇ ਹੁਣ ਤੱਕ ਜਾਨ ਬੁਟਕੇ ਹੋਵੇ ਹਾਂ ਉਹ ਸਮਰਸ਼ਾਸਕ ਉਹ ਪਾਪ ਜਾਂਦੇ ਤਸੇ ਸਾ ਜਦ ਵੀ ਕਾਮ ਜਿਉਂ ਨਾ ਬੇਚਨ ਨਹੀਂ ਬਣਾਉਂਦਾ ਚੱਕੇ ਸਫਲ ਸ਼ਾਸਕ ਦਾ ਟੋਗ ਨੂੰ ਸੱਲੇ ਆ ਜਿਹੀ ਉਹ ਤਾਂ ਅਰਧਨ ਅੱਜ ਕੀ ਤੇ ਤੂੰ ਇਥੇ ਲਾ ਕੇ ਢੋਗਣਾ ਪੂਰੀ ਰੱਜ ਕੇ ਬੇਇਮਾਨੀ ਨਾਲ ਸੋਣੇ ਕਿੱਡੀ ਆਹ ਕਿਉਂ ਕਿਉਂਕਿ ਪਹਿਲਾਂ ਇੱਕ ਧਰਤੀ ਕਰ ਬੈਠਿਆ ਹੋ ਉਹ ਰਾਏ ਢੀਂਗਦੇ ਬੈਠਾ ਕੋਈ ਗੁਰਦਾਰਿਆਂ ਦੇ ਅਵਲ ਵਿੱਚ ਮੂਰਤੀ ਪੂਜਾ ਦਾ ਕੋਈ ਵਿਦਾਨ ਉਹ ਮੂਰਤੀਆਂ ਦੀਆਂ ਅਗਰੇ ਜਾਣ ਫਿਰ ਉਹ ਵੀ ਭਗਵੇਂ ਸਾਰੇ ਦਸਵਾਲ ਇਟਾਂਜੋਂ ਮਿੱਟਾ ਨਾਪੇ ਵਾਲੇ ਨੂੰ ਸੱਕੜਿਆ ਗਉਰੀ ਤੋਂ ਪ੍ਰੈਸ਼ਰ ਤੇ ਰਾਜਨੇ ਤੋਂ ਕੁੜਬੋ ਆ ਰਾਜਨੇ ਕਾ ਵੀ ਰਾਜ ਨਹੀਂ ਨਾ ਪਰਸਾਨ ਕਾ ਥੋੜਾ ਰਾਜ ਚਰਨਾ ਇੱਕ ਮਿੰਟ ਪੰਟ ਤੋੜਤੀ ਸਾਡੇ ਨਾਲ ਉਹਨੇ ਉਸ ਕੈਂਪਰੇ ਰਾਜ ਨਹੀਂ ਰਹਿਣਾ ਇਹਨੂੰ ਪਟਿਆਲੇ ਵਾਲੇ ਨੇ ਰੱਖਿਆ ਫਿਰ ਸਾਲ ਬਾਅਦ ਫੇਰ ਹਾੜੇ ਕੱਢ ਕੇ ਲਿਆ ਸਾਵੇ ਵਾਲੇ ਨੇ ਫੇਰ ਫੇਰ ਇਹਦੇ ਮਹਾਨ ਕੋਸ਼ ਲਿਖਾਇਆ ਕਿ ਐਸਾ ਮਹਾਨ ਕੋਸ਼ ਲਿਖਦੇ ਕੋਈ ਪੱਠ ਬੱਠ ਪੈ ਗਿਆ ਉਹਦੇ ਬਾਅਦ ਇਹ ਦੀਗਾ ਹੋਇਆ ਬਾਅਦ ਇਹ ਕੋਸ਼-ਕੋਸ਼ ਲਿਖਿਆ ਦੋਏ ਕੰਮ ਦਾ ਸਾਜੇ ਤੇ ਟੈਸਟ ਹੋਏ। ਉਹ ਲੋਟੀਕਾ ਸਾਡੇ ਕੋਲ ਹੈ ਨਹੀਂ। ਜਦੋਂ ਉਹ ਪਿਆਂ ਦਿਖਾਣ ਆਉਂਦੇ ਤੀਂ ਕਹਿੰਦੇ ਜੀ ਉਹ ਲੋਪਾ ਤੋਏ। ਉਹ ਤਾਂ ਜੀ ਸੰਧਰ ਆ ਜਾ। ਅਰ ਤਾਂ ਫਿਰ ਬਾਅਦ ਦੀ ਗੱਲ ਹੈ। ਜੇ ਬੋਲਦੇ ਜੇ ਕੇ ਅੰਗਰੇਜ਼ਾਂ ਨਾ ਆਜੇ। یہ گدوں تو کھوکھلے ਸਾਲ ہیں تقریبا کوئی 10 سے کو زیادہ ہو گئے دفتر ہے گے جو تو یہ سکیورٹی جو نے سر پر بندا ہے ایک اپانے مدت سے 4000 سال 4000 سال صحیح کہا نہیں رگلوان ہے تو تصویر نے کہ ہے نا دیش ਫਾਇਦ ਬੇਡ ਪ੍ਰਾਨ ਜਾਣੇ ਅਸੂਲ ਬੇਟਾ ਨੂੰ ਪ੍ਰਾਨਾਂ ਦਾ ਰਸਮੰਤਿਆ ਦਾ ਬੋਲ ਬੂਝੇ ਸਤਮਨ ਕੇ ਚੱਲੇ ਸੁਖ ਵਿੱਚ ਜਾਣੇ ਅਸੂਲ ਦੋਈ ਗੱਲ ਆ ਵੀ ਸੁਖ ਵੀ ਜਿਹੜਾ ਪਾਰ ਹੈ ਅਸੂਲ ਅੰਦਰ ਹੈ ਅਸੂਲ ਦੇ ਵਿੱਚ ਨਹੀਂ ਹੋ ਸਕਦਾ ਜੇ ਕੋਈ ਦੋ ਚੀਜ਼ ਅਸੂਲ ਦੇ ਸਿਚੋ ਉਹ ਕੈਦ ਹੋ ਜਾਂਦੀ ਜੋਤ ਕੈਦ ਕੀਤੀ ਨਹੀਂ ਜਾ ਸਕਦੀ ਸੱਚੀ ਦੇ ਵਿੱਚ ਦੋ ਜੇ ਇਹ ਅਸੂਲ ਬਾਹਰ ਹੈ ਜੋ ਤਦ ਤੱਕ ਰਵੇ ਤਾਂ ਕੈਦ ਹੋ ਉਹ ਬਾਹਰ ਹੋ ਅਸੂਲ ਅੰਦਰ ਰੋ कोई اصول ऐसी चीज नहीं शरीर कहती है श्रीदेव कहती है नो बिल्कुल कायदे नहीं हां कायदे हुक्म करके है सच है श्रीदेव दे वाचा का शरीर दे वाचा ਤੇ ਸਰੀਰ ਦੇ ਕਾਬੂ ਚ ਹੋਰ ਹੋਰ ਵਹਤੂਦਾ ਸਾਡੇ ਹੋਰ ਆਦੀ ਹੋਰ ਆ ਸੁਖਮੈ ਇਹ ਸੂਲੇ ਸਰੀਰ ਸੁਰੂ ਤੇ ਇਹ ਗੱਲ ਹੈ ਅਜੀਬੀ ਹੈ ਜਿਹੜਾ ਭੱਜਦਾ ਰਹੇ ਸੁਖਸਾਗਰ ਸੁਖਸਾਗਰ ਦੇ ਵਿੱਚ ਭੱਜਦਾ ਰਹੇ ਪੱਬਦਾ ਰਹੇ ਧੂਲ ਹੈ ਸੁਖਸਾਗਰ ਸੁਖਮ ਭੱਜਦਾ ਸੁਖਸਾਗਰ ਹੋਰ ਸਾਗਰ ਸੁਖਸਾਗਰ ਉਹ ਗਮਦੇ ਵਿੱਚੇ ਅਸੂਲ ਆਇਆ ਇਹਦੇ ਵਿੱਚ ਵੀ ਸੂਖਾ ਮੈਂ ਵੀ ਇਹ ਸੂਰਤ ਚੇਤਨਾ ਬਾਹਰ ਹੈ ਚਿਤ ਦੀ ਚਿਤ ਦਾ ਧਿਆਨੇ ਤੇ ਆਣਾ ਹੈ ਸਰੀਰ ਦੇ ਵੀ ਸਾਡੇ ਨਮਾਜ਼ ਚ ਸਾਰਾ ਬਾਹਰ ਹੈ ਹੁਰਾਦਾ ਉਹ ਇੱਛਾ ਨਾਲ ਚੱਲਦਾ ਆਇਆ ਣਾ ਤੁਹਾਡਾ ਇੱਛਾ ਨਾਲ ਚੱਲਦਾ ਤੁਹਾਡਾ ਹਾਰਟ ਵਗਦਾ ਉਹਦੀ ਉਹ ਗਾਂ ਵਿੱਚ ਬਸਦਾ ਬੁਲੀ ਚਾਹਾਂ ਚੱਲਦਾ ਚਲੋ ਇਹਨਾਂ ਖਿਆਲ ਮਦੀ ਬਦਲ ਲੈ ਦੇਰ ਮਾਰੀ ਬੋਲੇਵੇ ਸੇਕ ਕਿੱਡੀ ਦੂਰ ਆ ਜਾਂਦਾ ਸਤਾ ਪਤਾ ਨਹੀਂ ਜਾਂਦਾ ਸੇਕ ਆ ਤੇ ਜਿੱਥੇ ਬੈਠਾ ਜਾ ਆ ਚਪੜਾ ਗਰਮ ਹੋ ਕੇ ਸੇਕ ਲਾ ਕੇ ਤਾਉਂ ਤੇ ਸਿੰਘ ਹੋਦੀ ਗਰਮੀ ਆ ਸਰਦੀ ਅਜੂ ਨੂੰ ਜੀ ਨਹੀਂ ਪਾ ਸਕੋਂ ਚਲੋ ਚਾਰ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਚਾਰ ਵਰਨਾ ਕੋ ਦੇ ਉਪਦੇਸ਼ ਚਾਰੇ ਵਰਨਾ ਨੂੰ ਕੋਈ ਉਪਦੇਸ਼ ਦਵੇ ਚਾਰ ਬਾਣਾਂ ਨੂੰ ਹੋਵੇ ਵਖਰਾ ਵਖਰਾ ਇਹ ਹੋਵੇ ਜੇ ਇਹਨੂੰ ਆਪ ਦੇ ਦੇਣਾ ਇਹਨੂੰ ਤਾਂ ਸੰਜਾਸਰ ਦਾ ਇਹਨੂੰ ਦਿੱਤਾ ਜਾਂਦਾ ਲਗਾ ਇਹ ਮਾਹੀ ਬਿਖੇ ਦਿੱਤਾ ਜਾਂਦਾ ਹੈ ਇਹ ਜਿਹੜਾ ਪੰਡਤ ਆ ਉਹ ਪੰਡਤ ਦੂਆ ਗੂਰ ਪੰਡਤਾ ਹੋ ਇਹ ਨਾਮ ਦਾ ਉਪਦੇਸ਼ ਨਹੀਂ ਦਿੱਤਾ ਜਾ ਸਕਦਾ ਚਲ ਬਾਹਰ। ਕਹਿੰਦੇ ਜੇ ਕੋਈ ਸੁਣਵੇ ਛੁੱਟੋ ਛੱਕਾ ਟਾਲ ਕੇ ਬਾਦਿਆ ਕਰ ਬਲੀ। ਆਹੀ ਨਾਮ ਜੀ ਜੀ ਦੇ ਖਾਤਰ ਛੱਕਾ ਕਾਂ ਤੇ ਤਾਲ ਕੇ ਬਾਦਿਆ। ਰਾਮ ਰਾਮ ਨਹੀਂ ਦਿਓ ਆਹ ਜੀ ਹੋ। ਆਹੋ ਰਾਮ ਰਾਮ ਸਾਰਿਆਂ ਨੇ ਪਹਿਲਾਂ ਨਾ ਕਰੀ। ਉਹੀ ਗੱਲ ਵਰਤੀ ਜਿਹਨੂੰ ਸਿੱਖੀ ਦਾ ਗਿਆਨ ਸੀ ਉਹਦੇ ਸਰ ਤੇ 50 ਰੁਪਏ ਮਿਲਦੇ। ਹਾਂ। ਤਾਂ ਪੰਜ ਮਿਲਦੇ ਤੇ ਗਾਂਹ ਕਦੇ ਜਿਆਦਾ ਮਿਲਦੇ ਚਲੋ ਜੋ ਵੀ ਕੁਛ ਹੈ ਇਨਾਮ ਦਾ ਤੌਦਾ ਵੀ ਇਹਦੇ ਕੋਲ ਨਾ ਮੈਂ ਕਹਾਂ। ਫਿਰ ਉਹ ਗਿਆਨ ਉਹ ਖਤਮ ਕੀਤਾ ਦੂਆ ਡੁਪਲੀਕੇਟ ਗਿਆਨ ਪਿਆਰ ਕਰਕੇ ਥੋੜਾ ਫੈਲਾ ਦਿੱਤਾ। ਇਹ ਪਿੱਛੇ ਤੇ ਨਸਾਜਾ ਕੁਝ ਹੋਇਆ। ਜਿਹੜੇ ਹਾਲ ਕਹਿੰਦੇ ਨੇ ਕਿ ਇਹ ਗਿਆ ਨਹੀਂ ਸੁਆ ਅਸੀਂ ਜਿਹੜਾ ਨਬ ਚਾਲੂ ਕਰ ਦੇਣਾ ਉਹ ਕੌਣ ਹੈ ਕਿਹੜੇ ਤੜੇ ਦੇ ਨੇ ਉਹ ਆਪੇ ਉਹਨਾਂ ਦੇ ਪਿਛਾੜਾ ਜੀ ਪਹਿਲਾ ਕਿੱਧਰ ਖੜਦਾ ਕਿੱਧਰ ਨਹੀਂ ਖੜਦਾ ਇਹ ਗਿਆਨ ਠੀਕ ਹੈ ਜਿਹੜੀ ਗੱਲ ਖੋਜੀ ਹੈ ਸਹੀ ਹੈ ਇਹਦੇ ਵਿੱਚ ਕਵੀ ਕੱਢ ਦੇ ਤਾਂ ਸਮਝੀ ਇਹ ਗੱਲ ਝੂਠ ਹੈ ਤਾਂ ਦੱਸ ਬੜਾ ਭਾਰੀ ਇਲਜਾਮ ਲਾਇਆ ਹੋਇਆ ਬੜੀ ਭਾਰੀ ਇੱਕ ਬੇਨ ਦਾਅਵ ਕੀਤੀ ਹੋਈ ਆ ਜੇ ਸਾਜਿਸ ਗਲਤ ਬੇਨ ਦਾਅਵ ਕੀ ਕੇ ਕੋਰਟ ਚਲੇਗਾ ਤਾਂ ਸਾਫਤ ਇਹ ਸਾਬਤ ਕਰਾਂਗੇ ਕਿ ਕੋਰਟ ਚਲੇਗਾ ਵੀ ਕੋਈ ਇਹ ਹੋਇਆ ਨਹੀਂ ਹੋਇਆ ਗੁਰਬਾਣੀ ਜੋ ਲਿਖਿਆ ਆਇਆ ਸੀ ਇਹ ਜੋ ਗੁਰਬਾਣੀ ਚੋਂ ਸਾਬਤ ਕਰਾਂਗੇ ਉਹ ਇੱਥੋਂ ਕਰਨਾ ਉੱਥੋਂ ਕਰ ਜਿਥੋਂ ਆਖੜ ਸੁਣਦਾ ਹੋਵੇ ਉਹ ਅਸੇਧੂ ਦੇ ਦਸ ਆਪਣਾ ਜੀ ਤਿਆਰ ਕੋਰਟ ਜਾਂ ਜਦ ਨਹੀਂ ਲਾਪਰਤੂ ਸਹੀ ਇਹ ਚੇਪਰ ਕਰਕੇ ਭੇਜੂ ਹੈ ਨਾ ਹਾਂ ਜਿਉਂ ਕਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਉਦੇਸ਼ ਕਿਉਂ ਕਰਨਾ ਕੋ ਦੇ ਚਾਰੇ ਬਨ ਨੂੰ ਇੱਕੋ ਜਿਹਾ ਬਣ ਕੇ ਉਪਦੇਸ਼ ਦਵੇ ਨਾਨਕ ਕਹਾ ਉਸ ਪੰਡਤ ਕੋ ਸਦਾ ਪੰਡਤ ਤੇ ਖਿਲਾਫ ਨਹੀਂ ਅਸੀਂ ਪੰਡਤ ਤੇ ਕਰਮ ਦੇ ਖਿਲਾਫ ਹਾਂ ਪੰਡਤ ਦੀ ਸੋਚ ਤੇ ਖਿਲਾਫ ਹਾਂ ਤੈਨੂੰ ਪੜਦਾ ਪੰਡਤ ਹੈ ਜੀ ਕੰਡੋ ਤੇ ਸ਼ਬਦ ਗੀ ਵਾਲਾ ਪੰਡਤ ਸੁਣਾ ਮਾੜੀ ਗੱਲ ਨੇ ਪੰਡਤ ਨੂੰ ਬਦਨਾਮ ਕੀਤਾ ਇਨਾਨੀ ਆ ਸ਼ਰਤਾਂ ਹੋ ਰਹੀਆਂ ਹੈ ਸੀ ਕਰਦਾ ਕਿਉਂ ਨਹੀਂ ਸੀ ਕਰਦਾ ਚਾਰਾਂ ਬੰਦਨ ਨੂੰ ਕੋਈ ਆਪ ਸਟੋਰੀ ਗੱਲ ਕਰਿਆ ਸੀ ਕੀ ਕਾਹ ਦੀ ਹੋੱਟਾਂ ਨੇ ਵਹਿਸ ਕੀ ਕੀਏ ਦਿੱਤੇ ਇਹ ਗੱਲਾਂ ਤੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਂ ਗੜਦਾ ਹੈ ਨਹੀਂ ਆਇਆ ਉਹਦਾ ਜਵਾਬ ਦਿੰਦੇ ਆ ਜੋ ਅੱਜ ਦੇ ਦਿਨ ਹੁਣ ਸੈਂ ਕਿ ਉਹਨੇ ਦਿੱਤਾ ਹਾਂ ਹਾਂ ਹਮਕਾ ਦਾ ਤੁਮਕਾ ਦਾ ਪੱਟਾ ਤਾ ਹਮਕਾ ਦਾ ਦੂਦ ਲੋਹੂ ਤੁਮਕਾ ਦਾ ਦੂਦ ਇਹ ਗੱਲਾਂ ਸਹੀਆਂ ਨੇ ਵੀ ਪਹਿਲੇ ਤੋਂ ਦੁੱਧ ਹੋ ਸਾਡੇ ਖੂਨ ਹੋ ਇਹ ਸਾਬਤ ਕਰ ਜੇ ਚੁੱਪ ਕਰ ਗਿਆ ਤਾਂ ਉਹਦਾ ਹਾਰ ਗਿਆ ਹਾਰ ਮੰਨ ਲਈ ਚੁੱਪ ਕਰ ਜਾਂਦਾ ਨਾ ਕੋਸ਼ਿਸ਼ ਫੇਰ ਨੈਟਵਰਕ ਨਹੀਂ ਤੋੜਦੇ ਫਿਰ ਧੂੜ ਦਾ ਪ੍ਰਚਾਰ ਹੋ ਹੀ ਸ਼ੁਰੂ ਕਰ ਦਿੰਦੇ થોੜੇ ਦਿਨ ਬਾਅਦ ਚੁੱਪ ਕਰ ਜਾਂਦਾ ਨੇ ਫੇਰ ਧੂੜ ਦਾ ਪ੍ਰਚਾਰ ਸ਼ੁਰੂ ਕਰ ਦਿੰਦੇ 50 ਚੁੱਪ ਕਰ ਦਬਾ ਲੈਂਦੇ ਨੇ ਜਾਂ ਉਹਗਾ ਦੇਖਦੇ ਆਉਣੇ ਹੋਣ ਕਰਕੇ ਫੇਰ ਜਾਂ ਦੇਖਦੇ ਨੇ ਕੋਈ ਗੋਲਦਾਰ ਨਹੀਂ ਖਰਾਬ ਫੇਰ ਜਦੋਂ ਉਹ ਕਿਆ ਸ਼ੁਰੂ ਕਰਦਾ ਆ ਇਹਦਾ ਕਾਬੂ ਜਾਂ ਜਦੋਂ ਉਹ ਆਉਂਦਾ ਜਾਂ ਤੇ ਗੋਲੇ ਇਧਰ ਚੱਲਦੇ ਨੇ ਜਦ ਤੱਕ ਸ਼ਲ ਆਇਓ ਸੱਤ ਕਾ ਜਸਾ ਚੜਿਓ ਰਹਿ ਬਾਣ ਜਦ ਇਹ ਚੰਗ ਸ਼ੁਰੂ ਹੁੰਦੀ ਹੈ ਇਧਰੋਂ ਇਹ ਕਬੀਰ ਵਾਲੀ ਤੋਪ ਚੱਲਦੀ ਹੈ ਗੋਲਾ ਗਿਆ ਚਲਾਇਆ ਕਹਿੰਦਾ ਪ੍ਰਪਗਤ ਸਾਜੇ ਪ੍ਰਗਾੜੀ ਕੋ ਚੋੜ ਸਜਾਇਆ ਇਹ ਉਹ ਚੱਲਦੀ ਹੈ ਜਾਂ ਫਿਰ ਦੇਖੋ ਭਾਈ ਜਾਣ ਗਿਆ ਜਾਂ ਨਹੀਂ ਸਭੇ ਉਡਾਤੀ ਭਰਮ ਦੀ ਛਾਤੀ ਰਹਿ ਨਮਾਇਆ ਵੰਦੀ ਇਹ ਇਹ ਵਸਵੇ ਚੁੱਕ ਗਏ ਉਹਨਾਂ ਦੇ ਘਰਾਂ ਦੇ ਵੱੜੇ ਲੋ ਜਾਂਦੇ ਨੇ ਵੀ ਦੇਰੀ ਲੰਮੀ ਲਾਇੰਰੋਪ ਫਿਰ ਕਲਾਮੇ ਬਾਅਦ